ਹਾਂਜੀ ਅਸ਼ਟਪਦੀ ਸੰਤ ਜਨਾਂ ਮਿਲ ਕੇ ਕਰੋ ਵਿਚਾਰ ਇੱਕ ਸਿਵਰ ਨਾਮ ਅਦਾ ਸੰਤ ਜਨਾਂ ਨਾਲ ਕਰੋ ਵਿਚਾਰ ਕਹਿੰਦੇ ਜੇ ਤੁਸੀਂ ਆਪ ਨਹੀਂ ਵਿਚਾਰ ਕਰ ਸਕਦੇ ਜਿਹੜੇ ਆਮ ਪਬਲਿਕ ਦੇ ਲੋਕ ਨੇ ਸੰਤ ਜਨਾਂ ਨਾਲ ਕੇ ਵਿਚਾਰ ਕਰ ਲੋ ਵਿਚਾਰਬੰਦ ਹੁੰਦੇ ਨੇ ਜਿਹੜੇ ਸੰਤ ਜਨ ਦੇ ਨੇ ਸੰਤਾਂ ਜਿਹੜੇ ਗਿਆਨਵਾਨ ਨੇ ਉਦਾਂ ਨਾ ਬਿਲਕੁਲ ਵਿਚਾਰ ਕਰਿਓ ਅਗਿਆਨੀ ਸੰਤਾਂ ਦਾ ਅਗਿਆਨੀ ਦਾ ਬਾਣੀ ਬਦਲ ਲਗੇ ਪਹਿਲਾਂ ਵੀ ਸੰਤ ਬਣ ਜਾ ਸੰਤ ਬਣ ਜਾ ਮਗਰ ਪਏ ਰਹਿਣਗੇ ਜਾਂ ਕਪੜੇ ਪਾੜੇ ਬਕਰਦੇ ਹੁਣ ਠੀਕ ਬਣ ਸੰਤ ਬਣ ਗਿਆ ਵਿਚਾਰ ਵਾਲੀ ਕੋਈ ਗੱਲ ਨਹੀਂ ਉਥੇ ਇੱਕ ਇੱਕ ਸਿਮਰ ਨਾਮ ਅਧਾਰ ਸਿਵਨ ਸਿਵਨਾ ਕੀ ਹੈ ਇੱਕ ਇਕਤਾ ਆਪਣਾ ਸਰਗੁਣ ਸਰੂਪ ਪੂਰਨ ਬ੍ਰਹਮ ਦਾ ਰੂਪ ਜਿਹੜਾ ਇੱਕ ਆਲਾ ਸਰੂਪ ਹੈ ਆਪਣਾ ਉੱਥੇ ਚਾਰ ਘਟਾ ਹੈ ਇੱਕ ਹੋਰ ਤੰਤਰ ਸੁਹਾਣਾ ਹੈ ਇੱਕ ਸਿਵਰ ਨਾਮ ਉਹ ਇੱਕ ਹੀ ਆ ਨਾਮ ਇੱਕ ਨਾਮ ਸਿਮਰ ਐ ਇੱਕ ਨਾਮ ਸਿਮਰ ਪੁਧਾਰਦਾ ਜਿਹੜਾ ਕਹਦਾ ਆ ਸਾਰੀ ਸ੍ਰਿਸ਼ਟੀ ਦਾ ਜਿਹਦੇ ਆਸਰੇ ਸਭ ਕੁਝ ਚੱਲਦਾ ਹੈ ਜਿਹਦੇ ਆਸਰੇ ਸਭ ਕੁਝ ਖੜਾ ਹੈ ਨਾਮ ਲੈ ਹੁਣ ਐਸੇ ਨਾਮ ਲੈ ਕੇ ਬਾੜਿਆ ਬੂਲ ਆਇਆ ਹਾਂ ਨਾਮ ਆਇਆ ਹੁਣ ਅਵਲੋਂ ਕਾਲ ਉੱਪਰ ਚਲੇਗੀ ਹਾਂ ਉਹ ਦੇਰ ਕੋ ਹਰੀ ਤੋਂ ਉੱਪਰ ਤਾਂ ਨਾਮੇ ਆ ਹਰੀ ਤੋਂ ਉੱਪਰ ਤਾਂ ਨਾਮੇ ਆ ਨਾਨਕ ਇਹ ਤਨ ਤਾ ਹਰ ਆ ਨਾਮ ਕਮਾਵਣਾ ਮਨ ਕੀ ਉਪਦੇਸ ਹਰ ਨਾਮ ਜੀ ਦਾ ਕਮਾਵਣਾ ਕੀ ਉਪਦੇਸ ਜਿਹਨੇ ਹਰ ਦੀ ਕਮਾਈ ਕਰਨੀ ਹਰ ਨਾਮ ਕੀ ਹੈ हर लोक की शक्ति है नाम दी ना। हर नाम से कमाई कर है ना नाम से कमाई की है नाम से कमाई से नाम तो जाओगी कान के तन सारता सार है हां जी संत जी करो विचार एक संगर नाम आधार शिवर्ण का करना है हुक्म ना करना है ਸਭ ਕੁਝ ਕਿਨੇ ਬਣਾਇਆ ਕਿਵੇਂ ਬਣਿਆ ਇਹ ਇਹ ਨਾਮ ਦਾ ਸੰਕਲਨ ਹੈ ਹੁਣ ਸਾਡਾ ਨਾਮ ਦਾ ਚੇਤਾ ਕਰੋ ਬਈ ਨਾਮ ਨੇ ਇਹ ਫਿਰ ਤਾਂ ਕੋਈ ਐਸੀ ਚੀਜ਼ ਤਾਂ ਹੈ ਉਹ ਇਹ ਤਾਂ ਸਿਸਟਮ ਬਣਾਈਆ ਕੰਟਰੋਲ ਕੀਤਾ ਉਹ ਗਿਆਨ ਜੀ ਨੇ ਸਭ ਕੁਝ ਬਣਾਇਆ ਉਹ ਨਾਮ ਦਾ ਉਹ ਨੂੰ ਲੋਕ ਕਹਿੰਦੇ ਨਾਮਕ ਗਿਆਨ ਨੂੰ ਕਹਿੰਦੇ ਇਹ ਇਹਨਾਂ ਲੋਕ ਦਾ ਗਿਆਨ ਪਲੱਸ ਆਤਮ ਗਿਆਨ ਜਿਹੜਾ ਹੈਗਾ ਉਹ ਉੜੋਂ ਕਦੇ ਜਿਹੜਾ ਚੇਤਨ ਦਾ ਸੱਚਾ ਗਿਆਨ ਹੈ ਉਹਨੂੰ ਲੋਕ ਕਹਿੰਦੇ ਗਿਆਨ ਸਾਡੇ ਕੋਲ ਅੱਡ ਅੱਡ ਵਿਸ਼ਿਆਂ ਦੇ ਵਿੱਚੋਂ ਛੋਟੇ ਅੱਡ ਅੱਡ ਵਿਸ਼ਿਆਂ ਦੇ ਗਿਆਨ ਨਹੀਂ ਛੋਟੇ ਲਗ ਲਗ ਬਹੁਤ ਛੇੜੇ ਗਿਆਨ ਪਰ ਜਿਹੜਾ ਤਿਰਲੋਕ ਦਾ ਪਲੱਸ ਚੇਤਨ ਨਾਲ ਜੜਦਾ ਗਿਆਨ ਹੈ ਤਿਰਲੋਕ ਦਾ ਇਕੱਠਾ ਸੁਭਚਾ ਜੀ ਸਾਰੇ ਹੀ ਗਿਆਨ ਆਗੇ ਉਹਦਾ ਨਾਮ ਸਾਰੇ ਗਿਆਨ ਉਹਦੇ ਵਿੱਚੋਂ ਹੀ ਕਦਾ ਹੋਏ ਨੇ ਸਾਰੀਆਂ ਬਤਾਂ ਉਹਦੇ ਵਿੱਚੋਂ ਨਿਕਲਣ ਐ ਦਸ ਪਾਜਾ ਤੂੰ ਹੀ ਨਾਨਾ ਤੇ ਵੀ ਤੂੰ ਹੀ ਸ੍ਰੀ ਭਗਵਾਨੀ ਤੂੰ ਹੀ ਹੋਅ ਤੂੰ ਹੀ ਫਲਾਨੀ ਮੱਤ ਹੈ ਤੂੰ ਹੀ ਸਾਰੀਆਂ ਮੱਤਾਂ ਨਿਕਲਣੀਆਂ ਉੱਥੇ तमाम ਦੁਨੀਆਂ ਆਂ ਬੁੱਧੀਆਂ ਦੀ ਗੱਲ ਕਰਤੀ ਉਹ ਰਾਹ ਲਿਆਂ ਮੱਤਾਂ ਦੇ ਸਿਰੇ ਤੇ ਜਾ ਕੇ ਜਾਦਾ ਸਿਰੇ ਤੇ ਜਾ ਕੇ ਸਾਰਿਆਂ ਨਾਲ ਗੁਰਮਤਿ ਸਿਰੇ ਤੇ ਜਾ ਕੇ ਬਬੇ ਬੁੱਧੀ ਹੈ ਫਿਰ ਇੱਕ ਹੋ ਜਾਂਦੀ ਹੈ ਜਿੱਤੇ ਸਾਰੀਆਂ ਮਤਾਂ ਜਾ ਕੇ ਇੱਕ ਹੋ ਜਾਣ ਜਿਹੜੇ ਵਿਭੋਤੈ ਨੇ ਫਿਰ ਵਿਚਾਰ ਡਿਫਰੈਂਸਸ ਹੁੰਦੇ ਨੇ ਜਿੱਤੇ ਆ ਕੇ ਖਤਮ ਹੁੰਦੇ ਨੇ ਉਹਨੂੰ ਬਿਵੇਕ ਕਹਿੰਦੇ ਨੇ ਜਿੱਤੇ ਮਤਾਂ ਦੇ ਡਿਫਰੈਂਸਸ ਸਾਰੇ ਖਤਮ ਹੋ ਜਾਣ ਆ ਕੇ ਉਹ ਆ ਕੇ ਸੱਚ ਤੇ ਖਤਮ ਹੋ ਉੱਥੇ ਫਿਰ ਬਿਵੇਕ ਫਿਰ ਉੱਥੇ ਕੋਈ ਮਤਭੇਦ ਨਹੀਂ ਜਿੱਤੇ ਮਤਭੇਦ ਨਹੀਂ ਇੱਕ ਹੈ ਉਹ ਬਿਵੇਕ ਹੈ ਜਿੱਤੇ ਮਤਭੇਦ ਸਮਾਪਤ ਹੋ ਗਏ ਜੇ ਕੋ ਵਿਚਾਰ ਖਤਮ ਹੋ ਗਏ ਡਿਫੈਂਸ ਜੇ ਵਿਚਾਰ ਹੁੰਦਾ ਮਨ ਤੇ ਜੇ ਬਾਦ ਮੇ ਖਤਮ ਹੋ ਗਏ ਕਰਿਆ ਗਿਆ ਉਹ ਬਵੇਕ ਬਵੇਕ ਪੂਰਨ ਲਗਿਆ ਹੈ ਪੂਰਨ ਬਵੇਕ ਕਾਣ ਅਵਰ ਵਿਸਾਰੋ ਚਰਨ ਕਮਲ ਰਿਤਮੈ ਔਰ ਤਾਰੋ ਕਿਉਂਕਿ ਬਬੇ ਗਿਆਨ ਕੇ ਆਤਮ ਗਿਆਨ ਲਾਈਏ ਸਾਇੰਸ ਦੀ ਵੀ ਗੱਲ ਹੁੰਦੀ ਹੈ ਉਹ ਠੀਕ ਉਹ ਨਾਮ ਜੇ ਤਾਂ ਝੜਦਾ ਇਕੱਠਾ ਹੈ ਉਹ ਇਕੱਠਾ ਅਬਰ ਉਪਾਅ ਕਮਾਵਣਾ ਨਾਮ ਦੇ ਹਰ ਆਮ ਦੀ ਕਮਾਈ ਤੋਂ ਬਨਾ ਸਾਧ ਤੱਕ ਦੀ ਕਮਾਈ ਤੋਂ ਬਨਾ ਜਿਹੜੇ ਹੋਰ ਬਾਵ ਨਹੀਂ ਸਾਡੇ ਚੱਲਦੇ ਅਬ ਉਹ ਬਾਵਾਂ ਨੂੰ ਤੁਰੇ ਬਸਾਂ ਉਹ ਬਾਵ ਹਨ ਨਾਮ ਦੇ ਖਿਲਾਫ ਨੇ ਬਾਵ ਹਨ ਜਿਨੇ ਬਾਵਾਂ ਨੇ ਆਉਦੀ ਬਰਸਾਤੀ ਕਰਦੇ ਸੀ ਉਹ ਕਹਿੰਦੇ ਨੇ ਜੀ ਤੇਰੇ ਘਰਾਏ ਮਾੜੇ ਨੇ ਉਹ ਦੱਸੋ ਨਾਮ ਦੇ ਖਿਲਾਫ ਨੇ ਹੁਕਮ ਦੇ ਖਿਲਾਫ ਨੇ ਕਹਿੰਦਾ ਉਹ ਗੰਦਾ ਗੰਦਾ ਫਲਾਨੇ ਦੇ ਕੋਤੇ ਰਾਹ ਨੁਕਸਾਨ ਹੋਣਾ ਉਹ ਪਾਉ ਦਸੋ। ਉਹ ਕੋ ਦੇਖਵਾ ਉਹ ਬੰਦੇ ਕਰਾ। ਤੇਰਾ ਨੁਕਸਾਨ ਹੋ ਜਾਣਾ ਉਹਦਾ ਪਾਉ ਦਸੋ ਆ ਪਾਉ ਕਰ ਲੈ ਬਚਾਓ ਕਰ ਲੈ। ਇਹਦੇ ਜੂਮਾ ਕਰ। ਬਾਗੀ ਕਰਦਾ ਇਸ ਤੂੰ ਮੱਸ। ਪਰਮੇਸ਼ਰ ਦੇ ਖਾਸ ਬਲਾਵਤ ਫਾਰੀ ਬਗਾਤ ਕਰੇ ਕਰਦਾ। ਸਿਧਾਰੂ ਪਰਮੇਸ਼ਰ ਦੇ ਖਿਲਾਫ ਖੜਾ ਕਰਦਾ ਸਾਰੀ ਉਲਟਾ ਸਾਰੀ ਉਲਟਾ ਹੁਕਮ ਤੋਂ ਉਤਾਰਾ ਉਲਟਾ ਆਬਰੋ ਬਾਪ ਸਭ ਮੀਤ ਬਸਾਰੋ ਆਬਰੋ ਬਾਪ ਸ ਇਹ ਵੀਤ ਸਾਰੇ ਬਾਪ ਬਸਾਰ ਦੋ ਉਹ ਨੁਸਾਨ ਤੁਹਾਡੇ ਉਹ ਤੁਹਾਡਾ ਤੜਾ ਦੁਆ ਬਣਉਣਾ ਨੇ ਵਿਰੋਧ ਹੈ ਹੁਕਮ ਸਾਖਣ ਦਾ ਇਹ ਦੇ ਬਾਪ ਨੇ ਸਾਰੇ ਹੋਰ ਕਾ ਨੇ ਜਾ ਜਦ ਤੁਸੀਂ ਪੁੰਨ ਕਰਦੇ ਹੋ ਇਹ ਭਾਈ ਪਾਉ ਡੀਏ ਤੇ ਕੀ ਕਰਦੇ ਹੋ ਗਿਆ ਪਾਪ ਪਾਉ ਕਰਨਾ ਮੈਂ ਕਰਤਾ ਆ ਗਿਆ ਨਾ ਕਰਦੇ ਵਿੱਚ ਕਰਦਾ ਹੋਮੇ ਦੇ ਵਿੱਚ ਕੀਤਾ ਹੈ ਜੋ ਵੀ ਕੁਛ ਹੈ ਉਹ ਪਾਪ ਜੋ ਧਰਮ ਕਰਮ ਨੇ ਕਰਮ ਧਰਮ ਪਾਖੰਡ ਇਹੀ ਪਾਪ ਦਨ ਜੰਮ ਜਾਗਾਸੀ ਰੁਕ ਜਾ ਉਹ ਜਿਹੜਾ ਸਾਰਤਨ ਹੋਊ ਉਹਨੂੰ ਨਹੀਂ ਕੋਈ ਲੁੱਟਦਾ ਜਿਹੜਾ ਸਾਰਤਨ ਸੀ ਉਹ ਕੋਈ ਨਹੀਂ ਉਹਦਾ ਤਸਕਰ ਨਾ ਲੈਵੇਂ ਇਹ ਜਿਹੜਾ ਬਾਹਰ ਇਹ ਆ ਉਹ ਪਾਉਦੇ ਇਹ ਵੀ ਸਾਰਦੋ ਇਹ ਵਿਰੋਧ ਕਰਦੇ ਨੇ ਜਾਵੇਂ ਲੁੱਟਦੇ ਉਹ ਕਹਿੰਦਾ ਕੱਲ੍ਹੇ ਬਾਅਦ ਆ ਜਾ ਬੜੇ ਬਾਪ ਕੀ ਆ ਜਾ ਉਹ ਰਾਕੇ ਮਾਰਦਾ ਰਹੇ ਹੈ ਗਰਗਨੂ ਨੇ ਕੰਮ ਕਰਦਾ ਰਹੇ ਹੈ ਅਸ ਬੜੇ ਉਪ ਆਕਾ ਦਾ ਰਹੇ ਮੈਂ ਫਸਲਾ ਜਾਵਾਂ ਬੜੀਆਂ ਜ਼ਬਾਰਦਾ ਵੀ ਲੋਈਆਂ ਨੇ ਤਾਂ ਫੜਦੇ ਹੁਣ ਜਦ ਭਾਜਾਂ ਨਾ ਫਿਰ ਆਪਣੇ ਗਾਂ ਪੁੱਛ ਲੈਣ ਤੇ ਸਬਾਬ ਕਰਦੇ ਨੇ ਔਰ ਉਹ ਪਾਵ ਸਭ ਮੀਤ ਵਿਚਾਰੋ ਚੰਨ ਕਵਲ ਜਿਦ ਮਾਤ ਲਾਭ ਲਾਭ ਨੂੰ ਬੀਤ ਵਰਤੈ ਬੀਤ ਸਿੱਖੂ ਨਹੀਂ ਗਿਆ ਚੇਤੂ ਨਹੀਂ ਗਿਆ ਉੱਥੋਂ ਪ੍ਰੇਮਾ ਬਹੁਤੀ ਝਰੂ ਹੋਈ ਹੋਈ ਹੈ ਮੀਤ ਮੀਤ ਵਿਚਾਰੋ ਜਾਂਦੇ ਥੇ ਸਿੱਖਾ ਨੂੰ ਉਪਦੇਸ਼ ਹੁੰਦਾ ਸਾਰੇ ਦੂਰੀ ਰੂਪ ਤੇ ਸਾਰੀ ਮੀਤ ਹੈ ਇਹਦਾ ਮਤਲਬ ਪਖਤੀ ਸਾਰੀ ਵਰਲਡ ਵਾਸਤੇ ਹੈ ਇਹ ਦਿਖਾ ਵਾਸਤੇ ਨਹੀਂ ਹੈਗੀ ਵੀ ਤੀਕਲਾ ਉਹਦਾ ਕਿ ਸਿੱਖ ਕਹਿੰਦੇ ਅਸੀਂ ਵੀਰਾਂ ਸਿੱਖ ਦਾ ਦੁਸ਼ਮਣ ਹੈ ਗੁਰਬਾਣੀ ਦੇ ਤਾਂ ਗੁਰਬਾਣੀ ਦਾ ਖਲਾਉ ਖੜੇ ਤੂੰ ਜੀ ਕਹਿੰਦਾ ਮੈਨੂੰ ਸਾਨੂੰ ਕਿਹਾ ਤੁਹਾਨੂੰ ਕੋਈ ਨਹੀਂ ਮੀਤ ਕਿਹਾ ਵੀ ਤੋੜੂ ਗਿਆ ਜਿਹੜਾ ਫਾਮ ਨਹੀਂ ਕਰਦਾ ਵੀ ਤੋੜੂ ਗਿਆ ਜਿਹੜਾ ਗੱਲ ਮੰਨ ਲੂਗਾ ਉਹ ਵੀਤ ਕੁਝ ਨਾ ਮੰਨੂਆ ਵੀ ਦੇ ਨਾ ਨਹੀਂ ਮੰਨੂਆ ਖਰਾਬ ਹੈ ਜਿਹੜਾ ਇਹ ਗੱਲ ਮੰਨ ਲੂਗਾ ਅਸੀਂ ਕਹਾਂ ਭਾਈ ਮਿੱਤਰੋ ਆ ਗੱਲ ਬਸਾਰ ਦੋ ਜਿਹੜੇ ਛੱਡ ਦੇਣਗੇ ਉਹੀ ਮਿੱਤਰ ਹੋਏ ਫਿਰ ਉਹਦਾ ਮਿੱਤਰ ਕਹਿ ਰਿਹਾ ਏ ਤੁਹਾਨੂੰ ਤੁਸੀਂ ਗੱਲ ਮੰਨਦੇ ਦੀ ਇਹਦਾ ਬੰਦਾ ਵੀ ਚੱਲ ਨਹੀਂ ਹੈਗਾ ਤੁਸੀਂ ਫਿਰ ਸੱਦਰੋਂ ਉਹ ਕਹਿੰਦਾ ਵੀ ਇਹਦੇ ਮਿੱਤਰ ਮੰਨ ਲੈਣਾ ਅਸੀਂ ਤਾਂ ਬੰਦੂ ਥੋੜਾ ਤਾਂ ਨਾ ਦੂਆ ਹੋ ਗਿਆ ਜਿਹੜੇ ਇਹਨਾਂ ਦਾ ਥੋੜਾ ਦੂਆ ਹੋ ਗਿਆ ਜੋ ਗੁਰੂ ਕਰਨੇ ਕਹੀ ਗੱਲ ਬੀੜਿਆਂ ਨੇ ਮੰਨੀ ਨਹੀਂ ਮੰਨੀ ਬੀਤ ਕੇ ਬਣਾਉਗੇ ਪਰ ਆਪਣੇ ਜਿਹਨੇ ਤੀਰ ਮੰਨ ਲਿਆ ਹੋਰ ਜਿਹੜੇ ਉਹਨਾਂ ਨੇ ਮੰਨੀ ਜਿਹੜੇ ਨਹੀਂ ਮੰਨਦੇ ਉਹ ਸਰ ਨਹੀਂ ਹੈ ਆਪਣਾ ਨੁਕਸਾਨ ਕਰਨ ਤੇ ਸਾਡਾ ਇਰਜ਼ਾ ਨੁਕਸਾਨ ਤਾਂ ਆਪਣੀ ਕਰਨ ਆਪਣਾ ਨੁਕਸਾਨ ਹੋਣਾ ਹੈ ਨੁਕਸਾਨ ਉਹਨਾਂ ਨੂੰ ਇਹ ਹੈ ਵੀ ਇਹ ਨਾਲ ਦੁਨੀਆਂ ਦੇ ਵਿੱਚ ਜਾਜਾ ਗੱਲ ਨਾ ਹੋ ਜਵੇ ਉਹਨਾਂ ਨੇ ਜਾਇਕਾਰ ਕੇ ਆਪਣੀ ਦੇ ਕੀ ਲੈਣਾ ਪ੍ਰਮੇਸ਼ਰ ਦੀ ਜਾਇਕਾਰ ਦੀ ਗੱਲ ਐ ਇੱਥੇ ਬੰਦਿਆ ਦੀ ਉਹ ਅਸਲ ਤੇ ਪਰਮੇਸ਼ਰ ਦੇ ਮੁਕਾਬਲੇ ਆਪਣੀ ਜਾਇਕਾਰ ਚਾਹੁੰਦੇ ਨੇ ਲੋਕ ਇਹ ਜਦ ਬੰਦਾ ਆਪਣੀ ਜਾਇਕਾਰ ਚਾਹੁੰਦਾ ਨਾ ਪਰਮੇਸ਼ਰ ਦੇ ਮੁਕਾਬਲੇ ਚ ਫੇਰ ਉਹ ਕਰ ਚੜਦਾ ਅਸੇਸਾ ਖਤਾ ਫੇਰੋ فیرو ساکت ہے۔ شری کے بندا خدا دا شری کے خدا بڑدا جد۔ جو جڑا اسی کہندے پوت ماتا۔ اوتاں دی ہے شری کے خدا اے پھرو۔ اے دا نام کوئی ور ماتا۔ ایہہ ور ماتا نہیں کہندے۔ کبیر ماتا نہیں کہندے۔ کبداش ماتا نہیں کہندے۔ کہندا کوئی گور ماتا گور ماتا کہیناں۔ او جڑی بندے دے ਜਾਇ ਉਹ ਸਨਾਕਨ ਮਸਤਾ ਉਹ ਇਹਦੇ ਵਿਰੋਚ ਖੜੀ है। ਜੋ ਮਤਾ ਆਦਮੀ ਦੇ ਨਾਂ ਤੇ ਹੈ ਨਾ ਉਹ ਇਹਦੇ ਵਿਰੋਚਾ ਜੇ ਵਿਰੋਚੇ ਰਹੂਗੀ ਉਹਦੀ ਮਤਾ ਹੈ ਪਰਮੇਸ਼ਰ ਦੀ ਮਤਾ ਨਹੀਂ ਹੋਊਗਾ ਉਹoverline paude sariyo battaiyooverline paude ਦੁਨੀਆਂ ਜੰਨੀਆਂ ਸੰਸਾਰ ਦੀਆਂ ਮਤਾ ਦੇ ਉਪਾਦਾਂ ਸੀਆਂ ਨੇ ਉਹ ਵਿਸਾਰ ਦੋ ਕੱਲ ਇਹ ਹੈ ਬਹੁਤ ਦੱਸੇ ਨੇ ਦੂਜੀਆਂ ਮਤਾਂ ਦੇ ਉਹਦੇ ਵਿੱਚ ਵੀ ਚੰਗੀਆਂ ਗੱਲਾਂ ਨੇ ਕਿਸੇ ਹੱਦ ਤੱਕ ਚੰਗੀਆਂ ਨੇ ਬਾਅਦ ਵਿਰੋਧ ਵੀ ਕਰਦੀ ਉਹਦੇ ਬਹੁਤ ਗੱਲਾਂ ਤਾਂ ਹੀ ਉਥੇ ਟੱਟਣ ਆ ਜਾਣਾ ਹੈ ਆ ਰੁਕ ਜਾਣਾ ਹੈ ਉਹ ਜਰਾ ਫੜ ਜਾਣਾ ਤਾਂ ਤਕਲੀਆ ਨਾ ਤੁਸੀਂ ਤਾਂ ਬਸਾਰ ਰੁਕਿਆ ਉਹ ਨਾ ਤੋ ਜਾਣਾ ਪ੍ਰੇਮ ਨਹੀਂ ਪੈਦਾ ਹੁੰਦਾ ਨਾ ਕਿਸੇ ਜਾ ਕੇ ਨਫਰਤ ਪੈਦਾ ਕਰਦੀਆਂ ਕਾਜੀ ਗੋੜਦੜੀਆਂ ਜਾ ਕੇ ਕਾਹ ਪਹਿਲਾਂ ਤਾਂ ਠੀਕ ਹੈ ਕਾਹ ਜਾ ਕੇ ਕਾਜੀ ਗੋੜਦੜੀਆਂ ਨਾ ਦੁੱਧ ਵਿੱਚ ਪਹਿਲਾਂ ਤਾਂ ਦੁੱਧ ਹੈ ਕਹਾਂ ਜਾ ਕੇ ਕਾਂਜੀ ਗੋੜਦੇ ਸਾਡੇ ਵੀ ਕਾਂਜੀ ਗੋੜੀ ਐ ਸਖਾ ਕਾਂਜੀ ਗੋੜੀ ਐ ਜੋ ਪ੍ਰਚਾਰ ਆ ਸਭ ਕਾਂਜੀ ਗੋੜੀ ਵਾਲੀ ਐ ਤੁਸੀਂ ਕਹਿੰਦੇ ਨੇ ਹਰੂ ਸੱਤਾਂ ਨੂੰ ਨਾ ਇਹ ਸੱਤਾਂ ਨੂੰ ਕਹਾਰਿਆ ਨੇ ਉਹ ਤੇ ਵੀ ਤੁਸੀਂ ਕਾਂਜੀ ਗੋੜਤੀ ਜੋਗੀਆਂ ਨੂੰ ਕਹ ਰਹੇ ਨੇ ਗੁਰਦਾਸ ਹੂੰ ਕਾਂਜੀ ਪਾਸ ਸੀ ਗੁਰਦਾਸ ਨੇ ਆ ਪਾਈ ਐ ਗੁਰਦਾਸ ਤੇ ਪੁਆਈਆ ਨਾ ਸੱਤਾਂ ਦਾ ਲਾਉਂਦੇ ਨੇ ਗੁਰਦਾਸ ਸਾਹਿਬ ਕਾਂਜੀ ਭਾਈ ਹੋਣੇ ਸਤਨਿਕ ਜਾਨ ਨੇ ਘੜੀ ਗੱਦੀ ਭਾਈ ਇਹ ਕੋਈ ਨਹੀਂ ਕੋਈ ਸਤਨਿਕ ਗੱਲ ਸੁਣੀ ਜਿਹੜਾ ਕਾਂਜੀ ਪਾਉਣ ਵਾਲਾ ਉਹ ਲੋ ਸਤਨ ਦਾ ਵਸਤ ਰਏ ਦੇਖੋ ਕਿੱਡੀ ਸ਼ਾਤ ਜਿਹੜੇ ਆਪ ਵਿਰੋਧ ਕਰ ਰਹੇ ਨੇ ਲੋ ਪੰਡਤ ਦਾ ਵਸਤ ਰਏ ਬਾਰ ਬਾਰ ਪੰਡਤ ਦਾ ਲੋ ਵਰਤੇ ਇਹ ਜਿਹੜਾ ਅੱਛਾ ਕਾਲਾ ਭਗਤ ਲੋ ਭਾਏ ਪੰਡਤ ਨੇ ਉਹ ਕਰਤਾ ਤੁਸੀਂ ਰਹੇ ਹੋ ਪੰਡਤ ਕਿੱਥੇ ਕਰ ਰਿਹਾ ਕੋਈ ਗੁਰਨਾਮ ਪੜਨੂਗਾ ਦਾ ਪੜਨ ਤੁਸੀਂ ਆਪੂ ਪੂਜਾ ਤੁਸੀਂ ਆਪ ਲੈਣ ਵਾਲੇ ਹੋ ਫੁਕੇ ਤੁਹਾਡੇ ਸਾਰੇ ਉੱਤੇ ਰਖੂ ਪਰ ਜਿਹੜੇ ਉਹ ਕੌਣ ਸੀ ਉਹ ਜਿਹੜੇ ਬਸੰਦ ਫੁਕੇ ਸੀ ਉਹਨਾਂ ਦੀ ਹੁਣ ਕੱਢਣੀ ਪਊਗੀ ਛੀਟਰਾਲ ਉਹ ਕੌਣ ਸੀ ਪਿੱਛੇ ਤੇ ਉਹਨਾਂ ਦੀ ਹੋਰ ਕਰ ਦਿਖੋ ਇਹ ਜਿਹੜੇ ਬੰਦੇ ਬੋਲਦੇ ਨੇ ਇਹ ਉਹਨਾਂ ਦੀ ਹਾਲਤਾਂ ਨਹੀਂ ਕਰਦੇ ਕਿਉਂ ਇਹਨਾਂ ਦਾ ਡੀਏ ਨੇ ਕੀ ਹੈ ਇਹ ਦੇਖਣ ਨੂੰ ਜਿਹੜਾ ਆਦਮੀ ਜਿਹੜਾ ਬੋਲਦਾ ਕਿੱਥੋਂ ਹੋਣਾ ਪਿੱਛੇ ਕਿੱਥੋਂ ਆਇਆ ਹੈ ਇਹ ਡੀਐਨਏ ਕਿੱਥੋਂ ਇਹ ਗੱਲ ਦੀ ਲੋ ਇਹ ਗੱਲ ਲੜਾਈ ਹੋਈ ਸੀ ਵੀ ਸਿੱਖਾਂ ਦੇ ਵਿੱਚ ਆਵੇ ਜ਼ਿਕਰ ਰਣੀ ਦੀ ਤਾਂ ਲੜਾਈ ਤਰੀਕੇ ਨਾਲ ਸੀ ਦੁਨੀਆ ਤੇ ਛਾ ਜੀਏ ਚਿੱਤਰਖੜ ਦਾ ਹਰਿਆਣੇ ਵਾਲੇ ਕਹਿੰਦੇ ਅਸੀਂ ਉਹ ਜਦ ਜਿੱਥੇ ਮਾਇਆ ਆ ਜੂਗਾ ਆ ਜੂਗੀ ਆ ਜੂਗਾ ਤੇ ਇੱਕ ਤਾਂ ਥੋੜੀ ਰਹਿ ਕੇ ਮੈਂ ਜਾਊਂਗੀ ਪਰ ਰਹਿ ਕੇ ਜਾਊਗਾ ਹਾਂਜੀ ਅਵਰ ਉਪਾਅ ਸਭ ਮੀਤ ਵਿਸਾਰੋ ਚਰਨ ਕਮਲ ਰਿਤ ਮੈਂ ਉਰਧਾਰੋ ਅਵਰ ਉਪਾਅ ਸਭ ਮੀਤ ਵਿਸਾਰੋ ਸਾਰੇ ਉਪਾਅ ਬਸਾਰ ਦੋ ਚਰਨ ਕਬ ਜਿਹੜੇ ਚਰਨ ਕਮਲ ਨੇ ਜਿਹੜੇ ਗੁਣ ਨੇ ਕੋਮਲ ਗੁੜ ਕੋਮਲ ਕਮਲ ਕੋਮਨ ਦਾ ਰੋਈ ਹੈ ਫਵਨ ਦਾ ਫੁੱਲ ਕੋਮਲ ਹੁੰਦਾ ਫਵਨ ਦਾ ਫੁੱਲ ਬੜਾ ਕੋਮਲ ਹੁੰਦਾ ਕੋਮਲ ਨੇ ਛੇਲੇ ਕੋਮਲ ਨੇ ਗੁਣਾ ਉਹੀ ਪ੍ਰੇਮ ਹੁੰਦਾ ਉਹਨਾਂ ਚ ਸੱਤ ਗੁਣਾ ਚ ਪ੍ਰੇਮ ਨਹੀਂ ਹੁੰਦਾ ਕਟੜਵਾਦ ਦੇ ਕੋਮਲ ਨਹੀਂ ਹੁੰਦੇ ਗੁਣ ਕਟੜਵਾਦ ਦੇ ਫੁੱਲ ਪੱਥਰ ਵਰਗੇ ਹੁੰਦੇ ਨੇ ਉਹ ਕਬਰ ਨੂੰ ਛੜਤੀਏ ਪਥਰਾਂ ਚ ਧੀਰੇ ਜਵਾਰਾ ਦੇ ਵਿੱਚ ਕਬਲ ਲੱਗਿਆ ਕਬਲ ਤਾਂ ਗਿਆ ਕਬਲ ਦੇ ਫੁੱਲ ਨੇ ਉਤੇ ਧੀਰੇ ਜਵਾਰਾ ਸਰਦੀ ਹੀ ਹੋਦੇ ਇਹ ਖਤਮ ਆ ਬਿਜਾਰ ਸੰਤ ਜਨਾ ਮਿਲ ਕਰੋ ਵਿਚਾਰ ਇੱਕ ਸਿਵਰ ਨਾਮ ਉਹਦਾ ਸਤਜਨਾ ਮਿਲ ਕਰੋ ਵਿਚਾਰ ਤੇ ਸਤਜਨੋ ਸੰਤ ਜਨਾ ਦਾ ਮਤਵਾ ਸੰਤ ਜਨਾ ਨੂੰ ਸੰਬੋਧਨ ਜੇ ਸਤਜਨੋ ਜਿਵੇਂ ਆਪਾਂ ਕਹਿੰਦੇ ਆ ਇਹਨੇ ਸੰਤ ਜਨਾ ਕੇ संत जने ਇੱਕ ਦੂਰੇ ਨਾਲ ਮਿਲ ਸਕਦੇ ਨੇ ਜਿਹੜਾ ਮਿਲੂਗਾ ਜਾ ਕੇ ਉਹ ਵੀ ਸਤ ਜਨਾ ਹੈ ਜਿਹੜਾ ਵਿਚਾਰ ਕਰੂ ਬਰਾਬਰ ਦਾ ਆਦਮੀ ਵਿਚਾਰ ਕਰ ਸਕਦਾ ਦੁਬਾਰਾ ਤੁਨੂ ਗਾਵੇ ਇਹ ਕਰਕੇ ਸਤ ਜਨਾ ਨਾਲ ਕਰੋ ਵਿਚਾਰ ਸਤ ਜਨਾ ਨਾਲ ਮਿਲ ਕੇ ਵਿਚਾਰ ਕਰਨ ਦੀ ਗੱਲ ਨਹੀਂ ਜਿਹੜਾ ਮਜਿੱਤ ਕਹੇ ਉਹ ਵੀ ਸਤ ਹੈ ਗੁਰਸਿੱਖ ਹੈ ਨਾ ਪਈ ਆਪਣੇ ਜਿਹੜੇ ਬਰਾਬਰ ਦੇ ਨਾਲ ਦੇ ਸਾਥ ਜਾਂਦੇ ਸਾਰੇ ਗੁਰ ਨੇ ਉਹ ਨਾਲ ਨਾਲ ਬੈਠ ਕੇ ਵਿਚਾਰ ਕਰੋ ਮਨ ਨਾਲ ਵਿਚਾਰ ਨਹੀਂ ਕਰਦੀ ਪ੍ਰਭਾਨੀ ਮਨ ਮੁਖਾਂ ਨਾਲ ਵਿਚਾਰ ਕਰੇ ਤੇ ਮਨ ਮੁਖਾਂ ਦੀ ਭਾਸ਼ਾ ਤੇ ਗੁਰਮੁਖਾਂ ਦੀ ਭਾਸ਼ਾ ਦੇ ਫਰਕਾ ਉਥੇ ਕੁਝ ਵੀ ਨਿਕਲ ਨੂੰ ਨਹੀਂ ਹੈ ਸਬਾਇਬੈਸ ਤੇ ਇਹ ਉੱਥੇ ਨਕਣਾ ਕੋchna ਹੋ ਜੇ ਨਾ ਸੁਣਨੇ ਉਥੇ ਬਰੋਦਾ ਵਸ ਰਹਾ ਉਪਾਸ਼ਾ ਕਰੀ ਸੱਤ ਜਨਾ ਮਿਲ ਕਰੋ ਵਿਚਾਰ ਇੱਕ ਸਿਮਰ ਨਾਮ ਅਦਾ ਇੱਕ ਸਿਮਰ ਨਾਮ ਅਦਾ ਸਿਮਰ ਜੇ ਜਪਣ ਤੇ ਗੈ ਸਿਮਰਨ ਤੇ ਜਲ ਜਪ ਤੱਕ ਸਿਮਰ ਹਦਾ ਆ ਗੋਣ ਆ ਗਹਿ ਜਾਣਾ ਜੋ ਚੀਜ਼ ਭੁੱਲਿਆ ਉਹ ਭੁੱਲੀ ਨਹੀਂ ਹੁਣ ਜੋ ਭੁੱਲੀ ਚੀਜ਼ ਦੀ ਚੇਤਾ ਆ ਗਿਆ ਇੱਕ ਸਮਰ ਇਹਦਾ ਮਤਲਬ ਦੋ ਸਮਰ ਨੇ ਸਾਡੇ ਕੋਲ ਤੁਮ ਤਾਂ ਜਦੋਂ ਸਮਰ ਹੁੰਦਾ ਨਾ ਅੱਗੇ ਆ ਜਾਣਾ ਆਗਲੇ ਕੋਦੇ ਜਿਸ ਤਨ ਕੋ ਰੰਗ ਦਾ ਦੇ ਤਨ ਚ ਇੱਕ ਧੰ ਐਜ ਜਿਹਦੇ ਵਾਸਤੇ ਚਾਰੇ ਪਾਸੇ ਭੱਜਿਆ ਫਿਰਦਾ ਸੰਸਾਰੀ ਧੰ ਉਹਦਾ ਵੀ ਸਮਝਣਾ ਸਾਡੇ ਕੋਲ ਉਹਦੇ ਸਾਰੇ ਦੌੜੇ ਜੇਤਾ 24 ਘੰਟੇ ਉਹਦਾ ਹੀ ਸਮਝਣਾ ਇਹ ਆ ਦਾ ਉਹੋ ਦੁਕਾਨਦਾਰ ਹੀ ਹੈ ਸਭ ਕੋਈ ਹੈ ਨੌਕਰੀ ਹੈ ਜੇਤਾ ਕਾ ਉਹ ਡਿਊਟੀ ਦਾ ਜੇਤਾ ਤਤ ਦਾ ਜੇਤਾ ਇਹ ਸੰਸਾਰੀ ਸਮਝਣਾ ਸੰਸਾਰੀ ਤਾਂ ਦਾ ਬਾਹਲੇ ਸ਼ਰੀਰ ਵਾਸਤੇ ਬਾਲੇ ਸਰੀਰ ਦੇਆਂ ਲੋੜਾਂ ਦਾ ਚਿੰਤਾ ਬਾਲੇ ਸਰੀਰ ਦੇਆਂ ਲੋੜਾਂ ਦੀ ਚਿੰਤਾ ਚਿੰਤਾਵਾਂ ਕਿੰਨਾਂ ਇਕੱਠੇ ਹੀ ਨੇ ਚਿੰਤਾਵਾਂ ਹੋਰ ਚਿੰਤਾ ਦੇ ਵਿੱਚ ਕੋਈ ਫਰਕ ਨਹੀਂ ਇੱਕ ਸਿੱਕੇ ਦੇ ਦੋ ਪਹਿਲੂ ਨੇ ਇੱਕ ਚਿੰਤਾ ਤਾਂ ਚਿੰਤਾ ਪੈਦਾ ਕਰਦਾ ਇੱਕ ਚਿੰਤਾ ਚਿੰਤਾ ਨੂੰ ਖਾਦਾ ਜਿਹੜਾ ਤਾਂ ਏਕ ਸਮਰ ਵਾਲਾ ਚਿੰਤਾ ਉਹਦਾ ਚਿੰਤਾ ਦਾ ਨਾ ਆ ਸਕਦਾ ਚਿੰਤਾ ਨੂੰ ਖਾ ਜਾਂਦਾ ਜਿਹੜਾ ਜਿਸ ਧਨ ਕੋ ਚਾਰ ਕੋਟ ਟੁਟ ਧਾਵਾ ਇਹ ਚਿੰਤਾ ਇਹਦਾ ਚਿੰਤਾ ਨਾ ਜਿਹੜਾ ਇਹ ਚਿੰਤਾ पैदा ਕਰਦਾ ਜਿਸ ਕਰ ਬਹੁਤ ਕਿਸੇ ਕਰਾ ਚਿੰਤਾ ਜਿਉਂ ਧਨ ਬਦੂਗਾ ਚਿੰਤਾ ਬਦੂਗੀ ਇਹਦਾ ਚਿੰਤਾ ਚਿੰਤਾ ਪੈਦਾ ਹੀ ਕਰਦਾ ਜੇ ਆਧਾਰ ਤੇ ਗੱਲ ਕਹੀ ਹੋਈ ਹੈ ਤਾਂ ਪਹਿਲੀ ਗੱਲ ਕਹਿੰਦੇ ਆੜਜੀ ਲੱਗਦੀ ਤਾਂ ਨਾਲ ਉਹ ਗੱਲ ਹੋਰ ਹੈ ਉਹ ਤਨ ਤੇ ਪ੍ਰਾਪਤੀ ਕਿਥੋਂ ਹੋਊਗਾ ਉਹ ਗੱਲ ਹੈ ਉਹ ਤਾਂ ਦੀ ਗੱਲ ਹੈ ਦੋ ਪ੍ਰਕਾਰ ਦੇ ਤਤਤਾ ਹੋ ਕੇ ਇਕ ਤਰ੍ਹਾਂ ਰੋਜ਼ ਸਾਰੇ ਦੁਨੀਆ ਵਿੱਚ ਜਿਹੜਾ ਤਨ ਹੋ ਕੇ ਹੇ ਤਨ ਦੋ ਤਖੋ ਇੱਕ ਵਾਸਤੇ ਪੈਦਾ ਦੂਜੇ ਵਾਸਤੇ ਪੈਸਾ ਖਤਮ ਹੋਣੀ ਬਸ ਸਾਰਾ ਜਿਹੜਾ ਤਨਸਾਰ ਤਾਂ ਨਾ ਇਹ ਤਨ ਉਹ ਤਾਂ ਸੱਚਾ ਤਾਂ ਨਾਮਧਨ ਇੱਕ ਤਾ ਝੂਠਾ ਤਾਂ ਦੋ ਪ੍ਰਕਾਰ ਬਾਹਲਾ ਸਰੀਰ ਝੂਠਾ ਇਹਦੇ ਵਾਸਤੇ जो ਤਾਹਨ ਸਸਹਾਰੀ ਤਾ ਮਾਇਆ ਦਾ ਜੋਤ ਨਾ ਮਾਇਆ ਝੂਠੀ ਹੈ ਉਹ ਝੂਠਾ ਹੈ ਜੋ ਤਾ ਸੱਚੀ ਹੈ ਉਹਦੇ ਵਾਸਤੇ ਤਾ ਸੱਚਾ ਹੈ ਜਿਆਦਾ ਜੋਤ ਤੇ ਹੀ ਗੱਲ ਟਿਕੀ ਰਹਿਣੀ ਹੈ ਜਾਂ ਤਾ ਜੋਤ ਮਾਇਆ ਔਰ ਰਬ ਰਹਿਦੇ ਇਕੱਠੇ ਹੀ ਨੇ ਪਰ ਚਿੰਤਾ ਮਾਇਆ ਨੇ ਨਹੀਂ ਕਰਨੀ ਚਿੰਤਾ ਆਪਣੀ ਕਰਨੀ ਹੈ ਨਾਮ ਦੀ चिंता नहीं करनी नाम की चिंतान का चिंता से भरले सवण खोया कहता है सपरना है ता चिंतान है जे अपना आता है कम करना कर दे है सबने चेता वो कहे कल करना तो आज कर आज करना तो अब ਜਿੱਤਾ ਹੈ ਕਰਨਾ ਕਭ ਕਰ ਨਹੀਂ ਰਿਹਾ ਜਿੱਤੋਂ ਨਹੀਂ ਜਿਹੜਾ ਹੈਗਾ ਉਹ ਹਗਾ ਸਾਨੂੰ ਯਾਦ ਹੈ ਸਾਡੇ ਯਾਦ ਰੱਖ ਲੋ ਵਨ ਜਿਹੜਾ ਦੋ ਤੰਦ ਤੋਏ ਜੀ ਨਾ ਸਾਡੇ ਕੋਲ ਮਤਲਬ ਆ ਰਿਹਾ ਬਾਹਲਾ ਸਰੀਰ ਤੋਂ ਟਪਰੇ ਦੀ ਤੋਰ ਸੇ ਜਾ ਟਪਰੇ ਦੀ ਇਹ ਮਤਲਬ ਆ ਵੇਦ ਲਾਈ ਫਤ ਤੇ ਪ੍ਰੇਰਿਓ ਇਹਦਾ ਤਾਨਾ ਸੱਚਾ ਤਾਂ ਵੀ ਹੈ ਜਿਹੜਾ ਤਾਨਾ ਇਹ ਸੱਚ ਦਾ ਝੂਠਾ ਉਹਨੂੰ ਮੁਰਗਾ ਵਾਰ ਕੇ ਉਹ ਤਾਂ ਮੁਰਗਾ ਵਾਰਾ ਕਿਉਂਕਿ ਜਿੰਤਾ ਇਕੱਠੀ ਕਰਦਾ ਅਸਲ ਚ ਹਾਂਜੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਆਪਸ ਵਿੱਚ ਹੀ ਮਿਲ ਕੇ ਵਿਚਾਰ ਕਰੋ ਗੁਰਮਖਾਂ ਨਾਲ ਦੇ ਵਿਚਾਰ ਕਰੋ ਸਿੱਖਾਂ ਨਾਲ ਮਿਲ ਕੇ ਵਿਚਾਰ ਕਰ ਮਨੁੱਖਾਂ ਦੇ ਕੋ ਸਾਖਤ ਉਹਦਾ ਦੂਰ ਹੋਵੇ ਜਾਇ ਇਹ ਬਾਝਕ ਹੈ ਯਾ ਇਹ ਸੰਤ ਨੇ ਯਾ ਸਾਖਤ ਨੇ ਦੇਖੋ ਸੰਤ ਦੇ ਮੁਕਾਬਲੇ ਦਾ ਸਾਖਤ ਹੈ ਸਾਖਤ ਦੇ ਮੁਕਾਬਲੇ ਸਾਖਤ ਸੰਤ ਦੇ ਮੁਕਾਬਲੇ ਖੜਾ ਗੁਰਮੁਖ ਦੇ ਮੁਕਾਬਲੇ ਜਦ ਮਨ ਮੁਖਾ ਆਪ ਲੋਕ ਦਾ ਮਨ ਮੁਖਾ ਨਾ ਸਾਥ ਦੇ ਆਪ ਲੋਕਾਂ ਦਾ ਜਿਹੜਾ ਲੀਡਰ ਹੈ ਦੋਵੇਂ ਪਾਸੇ ਲਾਉਣ ਵਾਲਾ ਨਾ ਫਿਰੋਧ ਕਰਾਉਣ ਵਾਲਾ ਉਹ ਸਾਥ ਦੇ ਆ ਆਦਮੀ ਕਾ ਲੀਡਰ ਹੈ ਕਿ ਜਿਹੜਾ ਵਿਚਾਰੇ ਜਹੀ ਗੱਲ ਸੁਣਦਾ ਹੋਜੀ ਮੰਨਦਾ ਉਹ ਜਿਹੜਾ ਹਣ ਦੇ ਸੱਤ ਤੇ ਜ਼ੁਬਾਨ ਚ ਜਾਂਦਾ ਉਹ ਤਾਂ ਜੋ ਉਥੇ ਸੁਣਦਾ ਹੋ ਮੰਨਦਾ ਸੰਤ ਜਣਾ ਮਿਲ ਕਰੋ ਵਿਚਾਰ ਇੱਕ ਸਿਮਰਨਾ ਹੋਊਗਾ ਇੱਕ ਸਿਮਰਨਾ ਅੱਛਾ ਇੱਕ ਸਿਮਰੋ ਦੋ ਨਾ ਸਿਮਰੋ ਦੋ ਸ਼ਰੀਰ ਦਾ ਚੇਤਾ ਨਾ ਰੱਖੋ ਕਿ ਕਰੇ ਜਾਂ ਦਲੇ ਦਾ ਚੇਤਾ ਰੱਖੋ ਬਾਹਲੇ ਨਾਂ ਕੀ ਚੇਤਾ ਉਹ ਕਿਹੜੀ ਬਾਹਲੇ ਸ਼ਰੀਰ ਦੀ ਉਹ ਉਹ ਸ਼ਰੀਰ ਉਹਦਾ ਤੇਰਾ ਹੀ ਨੇ ਸ਼ਰੀਰ ਇਹਦਾ ਤੇਰਾ ਹੀ ਨੇ ਉਹਦੇ ਖਾਤਰ ਇਤਜ਼ਾਮ ਬਿਓ ਨੇ ਕੀਤਾ ਹੋਇਆ ਸਾਡੇ ਵੱਸ ਹੈ ਨਹੀਂ ਕੋ ਜਨਤਾ ਧਿਆਗਰ ਨੂੰ ਕਿਹਾ ਹੈ ਇਹ ਸਬੰਧ ਕਰ ਨੂੰ ਕਿਹਾ ਹੈ ਸੰਤ ਜਨਾਮਲ ਕਰੋ ਵਿਚਾਰ ਇੱਕ ਸਮਰ ਇੱਕ ਦੇਖੋ ਇੱਕ ਸਮਰ ਸੈਣੀ ਕਬੂਖਰ ਕੋਮਲ ਗ੍ਰਾਮ ਇੱਕ ਸਬਲ ਨਾਮ ਅਰ ਆਰਾਟ ਖੜਦਲ ਉਹ ਨਾ ਅਰਾ नाम, नाम के तारे. ਨਾਮ ਸਗਲੇ ਜਾਂਦੇ ਨਾਮ ਕੇ ਧਾਰੇ है ਜਾਂਦੇ ਖੁਦਾ ਆਧਾਰ ਹੈ ਸਾਰੀ ਸਤਿ ਧਾਰੇ ਆਧਾਰ ਕੀ ਜੜ ਕੀ ਚੇਤਨਾ ਆਧਾਰੇ ਹੋਣੀ ਇੱਕ ਸਪੰਗਾਮ ਇੱਕੋ ਨਾਮ ਉਥੇ ਇੱਕੋ ਨਾਮ ਕੇ ਤੇ ਇੱਕ ਨਾਮ ਕਹਿੰਦਾ ਤੇਰਾ ਇੱਕ ਨਾਮ ਤਾਰੇ ਸਤਿ ਆ ਇੱਕ ਦੇ ਨਾਲ ਨਾਮ ਲੱਗੂਗਾ ਇੱਥੇ ਅਧਾਰ ਕੱਲਾ ਢੜਦਾ ਅਧਾਰ ਲਾਉਣੇ ਹੀ ਵਰਨਾ ਹੈ ਇੱਕ ਸਬਰ ਨਾਮ ਜੋ ਕੇ ਹੈ ਸਭ ਕਾ ਸਦਾ ਕਲਵਣ ਕੀ ਨਾ ਅਵਰ ਉਪਾਪ ਸਭ ਮੀਤ ਵਿਸਾਰੋ ਇਹ ਨਾਮ ਦੇ ਆਧਾਰ ਨੂੰ ਬਣਾਉਣ ਤੇ ਬਿਨਾ ਜਿਹੜੇ ਹੋਰ ਸਾਰੇ ਉਪਾ ਕਰਦੇ ਹਾਂ ਬੀਤ ਔਰ ਉਪਾਪ ਸਭ ਮੀਤ ਬਸਾਰੋ ਚਰਨ ਕਮਲ ਦੇ ਤੇ ਮੈਂ ਉਰ ਮੀਤ ਜਿਹੜੇ ਹੋਰ ਉਹ ਨੇ ਸਾਰੇ ਗੁਰੂ ਘਰ ਹੋਰ ਬਾਪ ਕੀ ਨੇ ਪਾਕੀ ਸੰਸਾਰੀ ਮਤਾਂ ਦੇ ਸਾਰੇ ਉਪਾਵਨ ਜੋ ਸੰਸਾਰੀ ਮਤਾਂ ਇਹ ਤਾਂ ਹੋ ਵੀ ਗੁਰਮਤਿ ਇਹ ਭਲਤੀ ਹੈ ਗੁਰਮਤਿ ਦੀ ਸੰਤ ਜਨਾਂ ਮਿਲ ਕਰੋ ਇੱਕ ਸਮਰਨਾਮ ਇੱਕ ਗੁਰਮਤਿ ਦੀ ਕਮਤੀ ਹੈ ਇਹਦਾ कम करना ਜਿਹੜਾ ਮਨਮਤ ਬਕੀਨੇ ਵਾਲਾ ਫੇਰ ਨਹੀਂ ਬੈਗਰੂ ਬੈਗਰੂ ਕਰਨਾ ਸਵੇਰੇ ਉੱਠ ਕੇ ਜੋ ਰਹਿਤ ਮਰਿਆਦਾ है, ਪਾਠ करने ਪਾਠ ਪੜ੍ਹੇ और ਵੇਦ ਵਿਚਾਰਿਓ ਇਹ ਪੁੱਲ ਜੋ ਛੱਡ ਦਿਓ ਜੇ ਸਾਰੋ ਲਿਖਿਆ ਅਵਰ ਪਾਪ ਸਾਪੇ ਇਤ ਵਿਚਾਰੋ ਤੇ ਸਾਰੋ ਕਹਨੂੰ ਕਿਹਾ ਸੀ ਰਹਿਤ ਮਰਿਆਦਾ ਸ਼ੁਰੂ ਕਿਉਂ ਕੀਤੀ ਅਵਰ ਪਾਪ ਜਿਹੜਾ ਬੈਨ ਲਾਇਆ ਸੀ ਉਹ ਇਹ ਬੈਨ ਨੂੰ ਕਰਾਸ ਕਰਕੇ ਅਵਰਪਾਬ ਸ਼ੁਰੂ ਕਰਾ ਦਿੱਤੇ ਸਖਾਂ ਨੇ ਚਲੋ ਬੈਰੀਅਰ ਸੀ ਉਹ ਤਾਂ ਲਗਾ ਕੇ ਜਾਣਾ ਨਹੀਂ ਉਧਰ ਚਲੇ ਗਏ ਤੇ ਹੁਣ ਤਾਂ ਫਿਰ ਤਰਫਾਨਾ ਪਾ ਕੇ ਉਥੇ ਕਬਰਾਂ ਤੇ ਜਾਣਗੇ ਔਰ ਕਿਦਰ ਨਹੀਂ ਵੀ ਤਾਂ ਬੈਰੀਅਰ ਜਿਹੜਾ ਲਾਇਆ ਸੀ ਵੀ ਇਹਦਾ ਜਾਣਾ ਹੀ ਨਹੀਂ ਬੈਰੀਅਰ ਖੋਲਦਾ ਪਰ ਆਹ ਮਾਲਾ ਬੰਦ ਕਰਤਾ ਤੂੰ ਆ ਨਾ ਬਿਸਾਰਦਾ ਨਾਮ ਵਿਸਾਲ ਨਾਮ ਵਿਸਾਲ ਲੱਗੇ ਆ ਨਾ ਲਾਲਚ ਦੁੱਖੇ ਜਨਮ ਪ੍ਰਾਣੀ ਹੋ ਲਾਲਚ ਲੱਗੇ ਅੱਜ ਜਿਹੜਾ ਸੀ ਨਾ ਪੈਨ ਲਾਇਆ ਹੋਇਆ ਦੂਜਾ ਦੂਜਾ ਰਸਤਾ ਬੰਦ ਕਰਤਾ ਸੀ ਇਹ ਪੱਛਮ ਦੁਆਰਾ ਇਹੀ ਹੈ ਜੀ ਸੇ ਲੋੜ ਕੇ ਕਬੀਰ ਨੇ ਇਹ ਪੁੱਠੇ ਪਾਸੇ ਨਹੀਂ ਜਾਂਦਾ ਗਿਆਨਤਾ ਵਾਲ ਨੂੰ ਜਾਂਦਾ ਰਸਤਾ ਹੈ ਪੱਛਮ ਦੁਆਰੇ ਕੀ ਸੇ ਦੋ ਰਸਤੇ ਐ ਨਹੀਂ ਆ ਵੀ ਕੈਨੂੰ ਜਾਂਦਾ ਕੈਨੂੰ ਜਾਂਦਾ ਐ ਨਹੀਂ ਦੋ ਰਸਤੇ ਇੱਕ ਪਿੱਛੇ ਨੂੰ ਜਾਂਦਾ ਹੈ ਦੂਸਰ ਨੂੰ ਜਾਂਦਾ ਰਸਤੇ ਰਸਤੇ ਮਿਲਦਾ ਜਿੱਥੇ ਖੜਜੋ ਦੋਏ ਹੁੰਦੇ ਨੇ ਜਿੱਤੇ ਰੋਡ ਤੇ ਕਦੇ ਖੜਜੋ ਇੱਕ ਰਸਤਾ ਨਹੀਂ ਦੋ ਨੇ ਕਿ ਦਿੱਲੀ ਨੂੰ ਜਾ ਰਿਹਾ ਕਾ ਬਰਸਾਤ ਜਾ ਰਿਹਾ ਦੋ ਨਹੀਂ ਆ ਰਸਤੇ ਇੱਕ ਰਸਤਾ ਹੁੰਦਾ ਹੀ ਨਹੀਂ ਰਸਤੇ ਦੋ ਹੁੰਦੇ ਜਿੱਤ ਨੂੰ ਉਹ ਆਉਂਦਾ ਰਸਤਾ ਜੇ ਕੋ ਉੱਥੇ ਪਾਸੋਂ ਹੋਏਗਾ ਤਾਂ ਫਸਤਾ ਬਦਲ ਜਾਊਗਾ ਫਿਰਾਂਗੇ ਵੀ ਇਹ ਪਰ ਸਾਡੇ ਐਨੇ ਕਿਲੋਮੀਟਰ ਰਹਿ ਗਿਆ ਦਿੱਲੀਆਂ ਕਿਲੋਮੀਟਰ ਉੱਦੋਂ ਉਹ ਕਰੋਗੇ ਉੱਥੇ ਪਾਸੇ ਬੋਰਡ ਆਉਣਾ ਜਦੋਂ ਮੂਹ ਕਰੋ ਬੋਰਡ ਦੂਜੇ ਪਾਸੇ ਦੇ ਆ ਕੇ ਤੇ ਦੋ ਰਾਂ ਰਸਤੇ ਹੋਏ ਕਿ ਕੋਈ ਰਸਤਾ ਦੋ ਹੁੰਦੇ ਨੇ ਇੱਕ ਸਿੱਕੇ ਦੇ ਹੋਵੇ ਦੋ ਪਹਿਲੂ ਹੁੰਦੇ ਆ ਇਹ ਪੱਛਮ ਜੇ ਤਾਂ ਜਾਣਾ ਨਰਕਬਲ ਨੂੰ ਉਹ ਹੀ ਹਸਤਾ ਨਰਕਬਲ ਨੂੰ ਜਾਂਦਾ ਜੇ ਬਾਹਰੋਂ ਹੋ ਕੇ ਚੱਲੋਂ ਫਿਰ ਜੇ ਤਾਂ ਚਾਕੜਨਾ ਕੇ ਪਿੱਛੇ ਨੂੰ ਪੱਛਮ ਦੁਆਰੇ ਕੀ ਫਿਰ ਤਾਂ ਕਹੇ ਨਰਕਬਲ ਨੂੰ ਨਰਸਦੀ ਜੂ ਨਾਮ ਅਸਲੇ ਅਕਲ ਦਾ ਅਕਲ ਦਾ ਨੁਕਸਾਨ ਹੋਣ ਲੱਗਿਆ ਹਰ ਕੀ ਅਕਲ ਡਿਵੈਲਪ ਹੋਈ ਆ ਅਕਲ ਦਾ ਹੀ ਹੋਣਾ ਉਹ ਤਾਂ ਪ੍ਰਗਾਸ ਹੋਣਾ ਹੈ ਆ ਬੁੱਧ ਦਾ ਵਿਨਾਸ਼ ਹੋਣਾ ਹੈ ਇਹੀ ਰਸਤਾ ਗਿਆਨ ਦੇ ਵਿੱਚ ਘਾਟਾ ਪੈਣਾ ਹੈ ਆ ਗਿਆਨ ਵਿੱਚ ਵਾਧਾ ਹੋਣਾ ਇਹੀ ਰਸਤਾ ਫਿਰਦੇ ਦੇ ਵਿੱਚ ਭਰਮ ਬਦਨਾ ਆ ਭਰਮ ਦਾ ਨਾਸ਼ ਹੋਣਾ ਇਹੀ ਦੋ ਰਸਤੇ ਜੇ ਤਾਂ ਘਾਟਾ ਦੇਖੋ ਪਹਿਲਾਂ ਤਾਂ ਦੋ ਚੀਜ਼ਾਂ ਦੀ ਪਹਿਲਾਂਸ ਕਰਦਾ ਜੇ ਘਾਟਾ ਵਹਿ ਜਾ ਲਾਭ ਉਹ ਦੋ ਨੇ ਰਸਤਾ ਦੇ ਕੋਈ ਹੈ ਉਸੇ ਬਿਜ਼ਨਸ ਦੇ ਵਿੱਚ ਘਾਟਾ ਹੈ ਉਸੇ ਦੇ ਵਿੱਚ ਲਾਭ ਹੈ ਜਿਹਨਾਂ ਸੱਕਰ ਹਸਦੇ ਦੌਰ ਦੇ ਘਾਟੇ ਵਾਲਾ ਕੰਮ ਕਰੂਗਾ ਆ ਢੱਬੈ ਜੂਗਾ ਜਦਸਿਆ ਹੋਇਆ ਵੀ ਤੈਨੂੰ ਘਾਟਾ ਇਸ ਤਰੀਕੇ ਨਾਲ ਘਾਟਾ ਪੈ ਜੂਗਾ ਅਵਰ ਉਪਾਅ ਜੇ ਨਾ ਬਸਾਰੇ ਫਿਰ ਦੋਏ ਹੱਥ ਛਾੜ ਕੇ ਜਾਊਗਾ ਜੋਰੀਆ ਬਰ ਉਪਾਅ ਸਭ ਨੀਤ ਪ੍ਰਸਾਦ ਅਬਰ ਉਵਾਕੀਨ ਅਬਰ ਉਪਾਅ ਨੇ ਮੁਕਮਲ ਵਿਰੋਧ ਕਰਨਾ ਸਾਰੇ ਅਬਰ ਉਪਾਅ ਨੂੰ ਕਹੇ ਵੀ ਆ ਤਰੇ ਤੱਕ ਮੁਸੀਬਤਾਂ ਆਉਣ ਵਾਲੀਆਂ ਇਹਦਾ ਉਪਾਅ ਕਰ ਲੈ ਆ ਗੀ ਪਤਾ ਲੱਗਿਆ ਇਹਦਾ ਉਪਾਅ ਕਰ ਲੈ ਜਿਵੇਂ ਮਰੇ ਤੇ ਬਾਤ ਕੋ ਉਹ ਬੋਨੇ ਉਹ ਭਾਗਤ ਉਹਦੀ ਆਸਮਾਨੋਂ ਹੋਣਾ ਨਿਸ਼ਾਨੀ ਹੋ ਜੀ ਪਿੱਛੋਂ ਭਾਗਤ ਅਸੀਂ ਉਹਨਾਂ ਦੀ ساری ਜ਼ਿੰਦਗੀ ਕੀਤਾ ਉਹਨਾਂ ਦੀ ਕੀਤਾ ਆ ਕਰਨਾ ਸੀ ਉਹਨੇ ਉਹਨਾਂ ਦਾ ਕੀਤਾ ਲਈ ਅਸੀਂ ਉਹ ਭਾਗਤਾਂ ਨਾਲ ਉਹਦੇ ਵਿਸਾਰ ਤੋਂ ਇਹਦੇ ਨਾਲ ਕੁਝ ਨਹੀਂ ਆਉਣਾ ਹੈ ਅਬਰ ਸਭ ਮੀਤ ਵਿਸਾਰੋ ਆ ਜਿਨ੍ਹਾਂ ਨੂੰ ਕਿਹਾ ਵਿਸਾਰੋ ਉਹਨਾਂ ਨੂੰ ਮੀਤ ਕਿਹਾ ਕਿ ਕੰਵਿਟਰ ਮਿੱਤਰ ਮੈਂ ਤਨ ਉਹ ਵਧੀਆ ਦਿੰਦਾ ਹਾਂ ਜਿਹੜੇ ਸਾਡੀ ਗੱਲ ਮੰਨ ਲੈਣਗੇ ਉਹ ਮਿੱਤਰ ਨੇ ਜਿਹੜੇ ਨਹੀਂ ਮੰਨਣਗੇ ਉਹ ਨਹੀਂ ਮਿੱਤਰ ਕਿਉਂ ਮਿੱਤਰ ਜੋ ਉਹਨੇ ਕੋ ਯੋਗਤਾ ਦਿੱਤੀ ਕਿਉਂਕਿ ਸ਼ਰਤ ਲਾਈ ਸੀ ਜੋ ਹਮ ਸ਼ਹਿਰੀ ਸੋ ਜਿਹੜਾ ਸਾਥੋਂ ਵਿਰੋਧ ਗੱਲ ਕਰਦਾ ਉਹਨੂੰ ਮਿੱਤਰ ਕਹਾਂਗਾ ਨਹੀਂ ਪੜਾਈ ਤਾਂ ਤੁਸੀਂ ਪੜ੍ਹੋਗੇ ਉਠੀ ਪੜਾਈ ਪੜਾਉਂਦਾ ਜਿਹੜਾ ਰਸਤਾ ਕਹਿੰਦਾ ਇਹਨੂੰ ਨਾ ਜਾਓ ਇਹਨੂੰ ਜਾਓ ਲੋਕਾਂ ਨੂੰ ਉਹਨੇ ਮੈਂ ਤੇ ਕਿਹਾ ਦਿੱਤੀ। ਜਿੱਥਰੋਂ ਹੁੰਦਾ ਇਹਦਾ ਨਾਲ ਚੱਲਣ। ਸੱਜਣੋਂ ਹੁੰਦਾ ਚੱਲਦੇ ਨਾਲ ਚੱਲਦੇ ਉਸੇ ਰਸਤੇ ਚਲੇਗੇ ਰਸਤੇ ਅੱਪਾ ਚੱਲੀ ਜਿਹੜਾ ਵਿਰੋਧ ਦਾ ਰਸਤਾ ਹੋਵੇ ਉਹਨੂੰ ਬਿੱਤਾ ਦਿੱਤਾ ਜੀ। ਵਿਰੋਧ ਵਾਲੇ ਨਾਲ ਐਕਸੀਡੈਂਟ ਹੁੰਦਾ ਹੁੰਦਾ ਹੈ ਸ਼ਕਤ ਕਰਾਇਆ ਵਿਰੋਧ ਵਾਲੇ ਨਾਲ ਹੁੰਦਾ ਹੈ ਗੱਡੀ ਉਧਰ ਆਉਂਦੀ ਹੈ ਖੁਦ ਉਧਰ ਹੁੰਦੀ ਹੈ ਕਿ ਕਤਲ ਹੋ ਜਾਉ ਉਹਨਾਂ ਦੀ ਹੋਣੀ। ਕੋਲਾਂ ਜਾਂਦੇ ਗੱਡੀ ਦੇ ਕੱਕਰ ਦੁੱਤੀ ਹੁੰਦੀ ਉਹ ਤਾਂ ਉਹ ਜੇ ਕੋ ਦੇ ਪਿਛਾ ਲੱਗੇ ਹਾਂਜੀ ਅਬਰ ਉਹ ਪਾਉ ਬੀਤ ਬੀਤ ਬਸਾਰੋ ਚਰਨ ਕਮਲ ਵਿਦ ਚਰਨ ਕਮਲ ਰਿਤ ਮੈਂ ਚਰਨ ਕਮਲ ਰਿਤ ਮੈਂ ਇੱਥੇ ਕਮਲ ਜਿਹੜੇ ਚਰਨ ਕਮਲ ਨੇ ਹਿਰਦੇ ਦੇ ਵਿੱਚ ਕਲ ਆ ਚਰਨ ਕਮਲ ਦਾ ਬਾਹਰ ਕੋ ਐਨਾ ਪੈਰਾਂ ਨੂੰ ਚਲਣ ਕਮਲ ਲਿਖਿਆ ਸਰਦੇ ਹੁਣ ਇਹ ਰਤਮਾ ਦੇ ਉੱਤੇ ਕੋ ਮਹਲਾਵਾਂਗੇ ਤਾਂ ਚਲਣ ਬਹੱਲੇ ਨਹੀਂ ਆਉਂਦੇ ਕੋ ਪੈਰਾਂ ਨੂੰ ਜਿ ਫਰਕ ਪਿਆ ਹੋਇਆ ਚੜ ਪਾਠ ਕਰਨ 'ਚ ਫਰਕ ਪਿਆ ਹੋਇਆ ਇਹੀ ਸਾਥ ਸੀ ਚਲਣ ਕਮਲ ਰਤਮਾ ਚਲਣ ਕਮਲ ਕਿਲੇ ਜਿਹੜੇ ਹਿਰਦੇ ਵਿੱਚ ਨੇ ਪੁਰਤਾਰੋ ਉਹਨਾਂ ਨੂੰ ਹਿਰਦੇ 'ਚ ਧਾਰਨ ਰੱਖੋ ਬਾਹਰੋਂ ਨਾ ਲੇਓ ਇਲੇ ਗੁਣ ਹਿੱਤ ਦੇ ਵਿੱਚ ਨੇ ਉਹ ਗੁਣਾਂ ਨੂੰ ਬਾਹਰ ਉਹਨਾਂ ਦਾ ਪ੍ਰਦਰਸ਼ਨ ਨਹੀਂ ਕਰੀ ਰਹੂਗਾ ਉਹ ਹੁਣ ਤਾਰੋ ਹਰ ਦੇ ਵਿੱਚ ਧਾਲਨ ਕਰਕੇ ਉਹ ਦਿਖਾਵਾ ਨਹੀਂ ਕਰੀ ਉਹਨਾਂ ਦਾ ਕਹਿਣਾ ਹੈ ਦਿਖਾਵਾ ਮੈਂ ਬੜਾ ਦਿਹਾੜ ਦਿਖਾਵਾ ਕਰਨ ਦੀ ਲੋੜ ਨਹੀਂ ਚੱਲਣਾ ਕਮਲ ਰਹਿਤ ਮੈਂ ਪੁਰ ਤਾਂ ਉਹੇ ਵਿੱਚ ਧਾਰਨ ਕਰਕੇ ਰੱਖੋ ਕਿਤੇ ਹੈਗੇ ਉੱਥੇ ਹੀ ਰਹਿ ਦੋਨਾਂ ਨਾ ਜਿਹੜੇ ਲੋਕ ਦਿਖਾਵਾ ਕਰਦੇ ਨੇ ਉਹ ਦਿਖਾਵਾ ਜਿਹੜਾ ਉਹਦਾ ਮਤਲਬ ਹੈ ਕਿ ਦਿਖਾਵੇ ਦੇ ਵਿੱਚ ਉਹ ਐਂ ਖੋਣਾ ਉਹਨਾਂ ਨੂੰ ਉਸਤੀ ਵੀ ਛਾਉ ਦੀ ਮੇਰੀ ਬੜਿਆਈ ਹੋਵੇ ਮੈਨੂੰ ਲੋਕ ਧਾਰਨੂ ਕਰਣ ਹੋਟਲ ਛਾਪੇ ਰਹੋ ਜੀ ਉਹ ਬੇ ਦੁਨੀਆਂ ਦੀ ਜਿਹੜੀ ਵਡਿਆਈ ਹੈ ਇਹ ਬੜਾ ਨੁਕਸਾਨ ਕਰਦੀ ਹੈ ਦੁਨੀਆਂ 'ਚਆਂ ਵਡਿਆਈਆਂ ਤਰਸੇ ਜਲ ਇਹ ਜਗ ਜਾਲਿਆ ਨਾਮ ਨੂੰ ਕਿਸ ਨਾ ਪਹੁੰਚੂਗਾ ਤੇ ਆਹ ਆਪਣੇ ਵਡਿਆਈ ਵੱਲ ਚਲੇ ਜਾਊਗਾ ਘਰ ਸੇਵਾ ਵਾਲੇ ਘਰ ਸੇਵਾ ਦੇ ਤੇ ਦੇ ਤੇ ਦੀ ਗੋਸਾਹਣਾਂ ਕਹਿਣਾ ਜੋ ਬਣ ਲੱਗੇ ਨਾ ਬਿਸਰਗੇ ਆਪ opositic competition ਹੋ ਗਿਆ ਸੱਤਾ ਲਈ ਆਪ ਦੂਜੀ ਝਗੜੇ ਵਿੱਚ ਉਗਰਦਾ ਬੋਪਣਾ ਉਹ ਕਹਿੰਦਾ ਮੈਂ ਗਰਣਾ ਹੋਈ ਵੀ ਝਗੜੇ ਦਾ ਵਿਸ਼ਾ ਨਾਂ ਨਾ ਔਰ ਉਹ ਜਿਹੜੇ ਚਲਨ ਹਿਰਦੇ ਤੇ ਬਾਹਰ ਪ੍ਰਗਟ ਕਰਦੇ ਪਥਰ ਲਾ ਕੇ ਕੋਈ ਗੱਲ ਹੈ ਨਾ ਉਹ ਹਿਰਦੇ ਤੋਂ ਬਾਹਰ ਲਿਆਂਦੇ ਗੁਣ ਉਹ बाहर आ गया प्रदर्शन हो गया बढ़िया पत्थर लाया सी और लाया सी सोना चढ़या देखो सादा असली आ बनाता है ने आ है वो बाहर आके गुण गुण बाहर आके मैदान चल रहा शुरू हो गया कंपटीशन शुरू हो गया ये कंपटीशन तादी है जरा शर्माया का विषय नहीं है ਕਰਨ ਕਾਰਨ ਸੋ ਪ੍ਰਮ ਸੁਭਗਤ ਕਾਰਨ ਕਾਰਨ ਤੇ ਵੀ ਤਾਂ ਪ੍ਰਭੂ ਹੈ ਹੁਕਮ ਆ ਕਾਰਨ ਪ੍ਰਭੂ ਲੋਕ ਹੈ ਪ੍ਰਭੂ ਦੀ ਆਇਆ ਕਰਨ ਪ੍ਰਭੂ ਦਾ ਸੁਭਗਤ ਗਿਰਧਕਾਰ ਗਹੋ ਨਾਮ ਹਰਬ ਸੋ ਪ੍ਰਭ ਆਇਆ ਸੁਭਗਤ ਨਾਲ ਇਸੇ ਸੋਹ ਦਾ ਗਿਆ ਜਿਹੜਾ ਇੱਕ ਤਾਂ ਬੋਲੇ ਰਿਹਾ ਜਿਹੜਾ ਪਹਿਲਾ ਪ੍ਰਭਾ ਉਹ ਆਪਣੇ ਪ੍ਰਭੂ ਰਿਹਾ हां ओके अपने प्रभु जी सारे हां कर्ण कर्ण सो प्रभु सम्राट सो प्रभु के अनु सम्राट दृढ़ कर गहो नाम हर भक्त दृढ़ कर बहो नाम हर भक्त कर्ण करण दे बीच आदमी कुछ दी आदमी कहे कुछ मैं कर सकता हूं वो सम्राट दी है ना के सनु तत धर्म मनावा दी सकता ਜਸ ਜਗਦਾ ਪੜਾ ਸਕਦਾ ਸਮਝਾ ਨਹੀਂ ਸਕਦਾ ਪੜਾਉਣ ਨਾਲ ਸਮਝਾਉਣ ਤੇ ਫਰਕ ਆ ਪੜਾਦਾ ਸਕਦਾ ਟੀਚਰ ਸਮਝਾ ਨਹੀਂ ਸਕਦਾ ਸਮਝਣਾ ਉਹਨੇ ਆਪੇ ਤੇ ਸਾਰੇ ਨੂੰ ਸਮਝਾ ਸਕਦਾ ਹੋਵੇ ਸਾਰੇ ਕੁਝ ਦੇ ਨੰਬਰਾਂ ਦੇ ਬਾਸ ਹੋ ਜਾਣ ਫਿਰ ਤਾਂ ਸਾਰੇ ਕੁਝ ਨੰਬਰ ਦੇ ਬਾਸ ਪੜਾਦਾ ਸਕਦਾ ਸਮਝਾ ਨਹੀਂ ਸਕਦਾ ਸਮਝਣਾ ਉਹਨੇ ਆਪੇ ਉਹਦੀ ਬੁੱਧੀ ਦੇ ਲੈਵਲ ਨੇ ਸਮਝਣਾ ਜਾਂ ਉਹਦੀ دلچਸਪੀ ਦੇ ਸਮਝਣਾ ਔਰ ਟੀਚਰ ਦੇ ਵਾਸਤੇ ਗੱਲ ਵੀ ਪੜਾ ਸਕਦਾ ਹਾਂ ਸਾਰੇ ਸਮਝ ਆਦੀ ਸਕਦਾ ਹਾਂ ਹਾਂ ਕਰਮ ਕਰਮ ਸੋ ਪ੍ਰਭੂ ਸਮਰਾਥ ਦ੍ਰਿੜ ਕਰ ਗਹੋ ਨਾਮ ਹਰ ਪਾਸੋਂ ਕਰਣ ਕਰਣ ਸੋ ਪ੍ਰਭੂ ਸਮਰਾਥ ਦ੍ਰਿੜ ਕਰ ਗਹੋ ਨਾਮ ਹਰ ਪਾਸੋਂ ਇਸ ਕਰਕੇ ਨੀ ਨਾਮ ਦੀ ਵਸੂਤ ਤੁਸੀਂ ਦ੍ਰਿੜ ਕਰਕੇ ਫੜੀਆਂ ਮੀ ਤੁੰਦੇ ਆ ਜਿਹੜਾ ਸਿੱਖਾ ਉਹ ਐ ਫੜਨੀ ਹੈ ਗੱਲ ਸਿੱਖਿਆ ਸਿੱਖਿਆ ਸਿੱਖਣਾ ਦੜ ਕਰਦੀਆਂ ਉਸੇ ਦੀ ਫੜਨੀ ਹੈ ਯਾਦ ਰੱਖਣਾ ਨਾਮ ਹਰ ਵਕਤ ਨਾਮ ਦੀ ਨਾਮ ਗਿਆਨ ਹੈ ਨਾ ਗੁਰਬਾਣੀ ਦਾ ਗਿਆਨ ਹੈ ਦੇਖੋ ਨਾਮ ਗੁਰਬਾਣੀ ਦੇ ਗੁਰਬਾਣੀ ਦਾ ਆ ਜੜੀਆਂ ਨਾ ਗੁਰਬਾਣੀ ਨੂੰ ਯਾਦ ਨਹੀਂ ਕਰਦੇ ਇੱਥੇ ਹੈ ਸਵਾਲ ਦੀ ਯਾਦ ਨਹੀਂ ਕਰਨਾ ਹੈ ਇਹ ਤਾਂ ਜਿਹੜੀ ਨਾਮ ਬਾਸ ਸੁਪਾਈਆਂ ਉਹਦੇ ਲੜੀਆਂ ਫੜ ਲੈਣੀਆਂ ਸਮਝ ਫੜ ਲੈਣੀਆਂ ਗੁਰਬਾਣੀ ਦੀ ਸਮਝ ਫੜ ਲੈਣੀਆਂ ਇਹ ਪਾਠ ਜਵਾਨੀ ਯਾਦ ਗੁਰ ਦੀ ਲੋੜ ਜਿਨ੍ਹਾਂ ਦੇ ਸਾਰਾ ਪਾਠ ਜਵਾਨੀ ਯਾਦ ਹੈ ਕਈਆਂ ਦੇ ਗੁਰੂ ਰਾਮ ਸਾਹਿਬ ਵੀ ਯਾਦ ਹੈ ਪਾਠ ਕਰਦੇ ਨੇ ਨੇ ਉਹਨਾਂ ਨੂੰ ਇੱਕ ਪੰਕਤੀ ਦਾ ਅਰਥਾਂ ਦਾ ਫਤਾ ਨਹੀਂ ਉਹਨਾਂ ਨੇ ਆਵਾਰ ਵਸਦੀ ਬੜੀ ਔੜ ਪੜ ਲਿਆ ਫੜਾ ਗਈ ਸੀ ਫੜਨੀ ਸਮਝੋ ਇਹ ਹਰਨਾਮ ਸਮਾਇਆ ਕਿ ਉਹ ਬਣ ਗਈ ਖਾਣੇ ਪਖੜਣੇ ਚੋਂ ਲੱਠੀ ਕੱਢ ਕੇ ਉਹਨਾਂ ਨੇ ਰੱਸੀ ਸੰਨੇ ਸਭ ਕੋ ਯਾਦ ਕਰ ਲੈ ਫੜਿਆ ਕੁਛ ਨਹੀਂ ਉਹ ਕਹਿੰਦਾ ਇੱਕ ਅੱਖਰ ਸਤ ਦੱਸ ਦੋ ਪੂਰੇ ਤੇ ਅਧਿਕ ਪੰਕਤੀ ਫਿਰ ਦੇਖੋ ਪੂਰਾ ਪੂਰਾ ਵਰਕਾ ਤੁਹਾਨੂੰ ਸੁਣਾ ਲਦੇ ਫੇਗੂ ਜੀ ਬੰਦੇ ਸਨ ਆ ਗਏ ਪਾਠ ਕੰਪੀਟੀਸ਼ਨ ਕੱਲ ਦਾ ਜਵਾਨੀ ਪਾਠ ਕਲਟ ਕਰਨਾ ਕੋਈ ਸ਼ਰਾਰਤੀ ਆਦਮੀ ਦੇ ਕਬਜ਼ੇ ਬਾਣੀ ਕਾਢ ਮੁਕਾਬਲੇ ਸ਼ਰਾਰਤੀ ਆਦਮੀਆਂ ਦੇ ਕਬਜ਼ੇ ਆ ਝੜਕਾਰ ਕਹੋ ਨਾਮ ਹਰ ਬਾਤੇ ਸ਼ਰਧਾਤਾ ਉਹ ਔਲਾਦ ਦਾ ਅਗੋਂ ਨਹੀਂ ਹਟਦੇ ਯਾਰ ਆ ਉਹਨਾਂ ਤੇ ਹਮਲਾ ਹੋਇਆ ਨਾ ਹੁਣ ਉਹਨਾਂ ਨੇ ਹੋਰ ਗੱਡੇ ਦਿੱ ਟੈਕਨੀਕਾ ਲੁਭੀਓ ਜਿਹੜੇ ਸੀ ਨਾ ਇਹ ਦੀ ਔਲਾਦ ਹੈ ਜਿਹੜੀ ਲੁਭਿਆ ਟੈਕਨੀਕਾ ਕਰਦੇ ਨੇ ਲੋਕਾਂ ਨੂੰ ਕਿਵੇਂ ਲਾ ਕੇ ਸੀ ਦੂਏ ਪਾਸੇ ਰੱਖਣਾ ਜਿੜ ਕਰ ਗਹੋ ਨਾਮ ਹਰ ਨਾਮ ਹਰ ਬੱਤ ਤੋਂ ਕਰਕੇ ਜਿੜ ਕਰਦੀ ਸੀ ਫੜੀ ਸੀ ਪਕੜ ਕੇ ਲਿਆਉਣਾ ਦਾ ਗੁਰਬਾਣੀ ਕਹਿੰਦੀ ਕੀ ਹੈ ਪੱਕੇ ਲੋੜ ਨਹੀਂ ਆ ਸਾਡਾ ਕੀ ਕਹਿੰਦੀ ਆ ਕੀ ਕਰਨਾ ਬਾਕ ਉਹ ਕਰਨਾ ਕੀ ਹੈ ਅਸੀਂ ਵਰਬਾਨੇ ਸਮਝ ਲੈਣੀ ਆ ਸਮਝ ਜਿਹੜੀ ਆ ਉਹ ਉਹ ਆਪਣੇ ਕੋਲ ਰੱਖ ਸਮਝ ਜੋ ਲਿਆ ਉਹਨੂੰ ਨਹੀਂ ਭੁੱਲਣਾ ਹਾਂ ਇਹ ਤੁਹਾਨੂੰ ਸੰਚੋ ਗੋਗੋਪਗ੍ਰੰਥ ਸੰਤ ਜਨਾ ਕਾ ਨਿਰਮਲ ਮੰਤਰ ਇਹ ਤੁਹਾਨੂੰ ਸੰਖੇਪ ਜੀ ਇਹ ਤਾਂ ਇਹਨਾਂ ਨੇ ਇਕੱਠਾ ਕਰ ਲਿਆ ਜਮਾ ਕਰ ਲਿਆ ਸੋਹੋ ભગવાન ਤੋਂ ਆ ਭਗਵਾਨ ਤੋਂ ਲਫ਼ਜ਼ ਆ ਗਿਆ ਆਦਮੀ ਵਾਸਤੇ ਆ ਗਿਆ ਭਗਵਾਨ ਚ ਕੋਈ ਫਰਕ ਨਹੀਂ ਭਗਵਾਨ ਤੋਂ ਭਗਵਾਨ ਇੱਕੋ ਹੀ ਲਫ਼ਜ਼ ਹੈ ਕੋਈ ਆਦਮੀ ਦਾ ਨਹੀਂ ਸੋਹੋ ਬੋਲਤ ਭਗਵਾਨ ਵੀ ਆਇਆ ਹੋਇਆ ਹੈ ਨੋ ਮੇ ਪਾਇ ਸਾਦਾ ਹੋਰਾਂ ਨੂੰ ਸੁਣ ਰਹੇ ਮਨਾਂ ਸੋ ਮੂਰਤ ਭਗਵਾਨ ਭਗਵਾਨ ਦੇਖੋ ਜਾ ਕੇ ਭਗਵੰਤ ਕੀ ਟਹਿਲ ਕੋਈ ਕੀਦੀ ਟਹਿਲ ਹੈ ਭਗਵੰਤ ਭਗਵਾਨ ਤਰ ਭਗਵਾਨ ਇੱਕੋ ਹੀ ਆਦਮੀ ਦੇ ਨਾਉਣੇ ਇਹਦਾ ਅਰਥ ਹੈ ਜੋ ਭੱਦਾ ਉਹ ਖੁਦੇ ਭਗਵੰਤਾ ਹੈ ਖੁਦੇ ਭਗਵਾਨ ਭਗਵਾਨ ਨਾ ਉਹਨੇ ਭਾਗਿਆਵਾਂ ਭਾਗਾਂ ਵਾਲਾ ਭਗਵਾਨ ਪਰਮੇਸ਼ਰ ਨੂੰ ਕਹਿੰਦੇ ਨਹੀਂ ਇਸ ਕਰਕੇ ਆਦਮੀ ਨੂੰ ਭਗਵੰਤ ਕਹਿੰਦੇ ਨੇ ਆਦਮੀ ਨੂੰ ਭਗਵਾਨ ਕਹਿੰਦੇ ਨੇ ਜਿਹੜਾ ਨਾਮ ਤਾਂ ਇਕੱਠਾ ਕਰ ਲਿਆ ਉਹ ਭਗਵੰਤ ਹੁੰਦਾ ਇਹਦੇ ਵਿੱਚੋਂ ਜਿਹੜੇ ਜੋ ਅਵਤਾਰਾਂ ਚੋਂ 10 ਅਵਤਾਰਾਂ ਦੇ ਨਾਮ ਕੱਠਾ ਕੀਤਾ ਬਨੇ ਹੋਇਆ 14 ਨੇ ਕੀਤਾ ਹੀ 24 ਦੇ ਵਿੱਚੋਂ 10 ਅਵਤਾਰ ਕਰ ਨੇ ਦਸਮ ਪਾਸ਼ਾ ਨੇ ਹੰਦੂ ਲਈ ਠੀਕ ਨੇ 14 ਅਜਕਤ ਕਰਤੇ ਉਹ ਭਗਵਾਨ ਨੇ ਉਹਦਾ ਇਹਦਾ ਮਤਲਬ ਇਹ ਨਹੀਂ ਵੀ ਹੋਰ ਹੋਏ ਜੀ ਉਹਨਾਂ 24 ਦੀ ਗੱਲ ਹੈ ਸਿਰਫ ਜਦੋਂ 24 ਇਹਨੇ ਉਹਨਾਂ ਦੀ ਗੱਲ ਹੈ ਸਿਰਫ 24 24 ਸਾਰੇ ਭਗਤ ਜਿਹੜੇ ਨੇ ਜਿਨ੍ਹਾਂ ਨੇ ਬਾਣੀ ਹੈ ਸਾਰੇ ਭਗਵਾਨ ਤੇ ਉਹਨਾਂ ਨੇ ਸਿਰਫ ਪੁਰਾਣੇ ਭਗਵਾਨ ਸਤਿ ਸ੍ਰੀ ਮੰਨਿਆ ਅਸਲ ਵਿੱਚ ਉਹਨਾਂ ਨੂੰ ਅਵਤਾਰਾਂ ਦੀ ਲੋੜ ਨਹੀਂ ਸੀ ਉਹਨਾਂ ਨੇ ਜਿਹੜਾ 14 ਡੁਪਲੀ ਕਿਹੜੇ ਜਿਹੜੇ ਅਵਤਾਰ ਪਾਏ ਨੇ ਗੁਰਦਵਾਨਾਂ ਨੇ ਇਹਨਾਂ ਨੇ ਉਹਦੇ ਕਰਕੇ 24 ਬਣਾਏ ਕੋਬੇ 14 ਉਹਨਾਂ ਨੇ ਜਲਦੀ ਬਣਾ ਲਏ 14 ਦਾ ਰਾਜ ਹੋ ਗਿਆ 10 ਗਾਇਬ ਕਰਤੇ ਫਿਰ 14 ਵੋਟਾਂ ਇੱਕ ਢਲੇ ਦੀਆਂ ਨੇ 10 ਇੱਕ ਦੀਆਂ ਨੇ ਹੁਣ 14 ਵਾਲੇ ਦਾ ਪ੍ਰਚਾਰ ਹੋ ਰਿਹਾ 10 ਵਾਲੇ ਦਾ ਹੋਈ ਨਹੀਂ ਰਿਹਾ ਦਾਦਾ ਨੂੰ ਵਾਲੇ ਨੂੰ ਜਾਨਦਾ ਕੋਈ ਗੱਲ ਨਹੀਂ ਕਰਦਾ ਹੈ ਨਾਲੇ ਦੀ ਗੱਲ ਨਹੀਂ ਕਰਦਾ ਗੱਲੇ ਦੋ ਦੀ ਕਰਦਾ ਦੋ ਦੀ ਕਰਦਾ ਕਲੇਸ਼ਨ ਦੀ ਆਗਮਨੀ ਉਹ 24 ਮੈਂ ਚੌਵੇਂ ਆਦਾ ਸਹੀ ਪਰ ਉਹ ਰਿਜੈਕਟ ਹੋਇਆ ਜੋ 14 ਹੈ ਉਹ ਨਾ 14 ਵਿੱਚ ਦੇ ਜੀਰੋਂ ਰਾਜੇ ਕਿਹਾ ਹੋਇਆ ਕਾਵੇਂ ਕਰ ਅਵਤਾਰੀ ਜੁਗ ਜੁਗ ਰਾਜੇ ਜੁਗ ਜੁਗ ਕਹੇ ਰਾਜੇ ਕਾਵੇਂ ਕਰ ਅਵਤਾਰੀ ਉਹ ਨਾ ਜਨੇ ਕੋਈ ਕਹਿੰਦਾ ਨਾ ਵੀ 24 ਜਿਹੜੇ ਨੇ ਅਵਤਾਰਾਂ ਤੋਂ ਬਿਨਾ ਅਸੀ ਪੂਜਾ ਨਹੀਂ ਕਰ ਸਕਦੇ ਪੂਜਾ ਦੱਖਣੈਸ਼ ਦੀ ਵੀ ਕਰਦੇ ਨਾ ਉਹ ਚਾ ਉਹ ਹੈ ਨਹੀਂ ਚਾ ਵੀ ਆ ਪੁੱਛਿਆ ਗਣਾਈ ਤੇ ਪੁੱਛਿਆ ਕਿਉਂ ਕਰਦੇ ਤਸੋ ਨੇ ਕਹੀ ਜੀ ਇਹ ਗੱਲ ਜਿਹੜੀ ਇਹ ਕਹਿੰਦਾ ਜਿਹੜਾ ਅੱਜ ਕਹਿ ਰਿਹਾ ਸ਼ੰਕਰਾਚਾਰੀ ਜੀ ਤਸੋ ਪਾਜਾ ਨੇ ਕਹੀ ਜੀ ਉਹਦੀ ਗੱਲ ਤਾਂ ਨਹੀਂ ਮੰਨੀ ਮੈਂ ਨਾਲ ਗਣਾਈ ਸੇ ਪਰ ਸੰਭਨਾ ਕਿਸ਼ਨ ਵਿਸ਼ਨ ਕਬ ਹੋਣਾ ਤੇ ਆਉਂ ਗ੍ਰਿਸ਼ਨ ਸੀ ਇਹ ਜੀ ਐਸ ਤੇ ਹੋਣਾ ਹੈ ਤੇ ਇਹਨਾਂ ਦਾ ਉਦੋਂ ਕਦੇ ਲਾਵਾਂ ਸੀ ਤੇ ਹੁਣ ਤਾਂ ਫਿਰ ਹੋਰ ਆਉਣ ਸਾਰੇ ਜੇ ਤੁਸੀਂ ਗਣੈਸ਼ ਦੀ ਪੂਜਾ ਕਰ ਸਕਦੇ ਹੋ ਤਾਂ ਸਾਈਂ ਬਾਬੇ ਦੀ ਹੋਊ ਪਤਾ ਨਹੀਂ ਹੋਰ ਕਿੰਨੇ ਕ ਆ ਜਾਣਗੇ ਜਿੱਦੜੀ ਕਰੋੜ ਤੁਹਾਡਾ ਦੇਵਤਾ ਜਿੱਧਰ ਦੀ ਕਿਤੇ ਪੂਜਾ ਨਹੀਂ ਹੁੰਦੀ ਅੱਛਾ ਕਿਹੜਾ ਦੇਵਤਾ ਅੱਛਾ ਦੀ ਪੂਜਾ ਕਰਦਾ ਨਾ ਉਹ ਕੌਣ ਲੱਗਦੀ ਕੁੜਾ ਦਾ ਹੈ असत्य लोग गए पढ़ खोज कर ना गए पिक्चरमड़ गया सारी स्टेट अगे तक इना दी सी इना लोकल नेता अर भुताने कोई पढ़ता नहीं सी पण और खोज कर उन्होंने देखा कि कह रहे सी सिमरदी कह है, अ अ है। दी कि है अयोग्य है है इजाजत नहीं दी बिल्कुल जेड़ा असत्य है अयोग्य है अचेदन है सिर्फियां दी करते ਉਹ ਮਹਾਸ੍ਰਾਮੀ ਗੱਲ ਕਹਿੰਦੇ ਸਮਝ ਗਿਆ ਨਹੀਂ ਦਰਮਾਸ ਕਹਿੰਦਾ ਖਾਦਾ ਵੀ ਗਉਂਦਾ ਉਹ ਉਹ ਕਹਿੰਦੇ ਇਹਨਾਂ ਦਾ ਸਾਰਾ ਹੀ ਝੂਠ ਦਾ ਪਰਦਾ ਖੁੱਲ ਜਾਣਾ ਆਪੇ ਜਿਹੜੇ ਰਾਖ ਯਾਤਰਾ ਦਾ ਪ੍ਰਚਾਰ ਕਰਦੇ ਰਹਿੰਦੇ ਕਰੋੜਾ ਰੁਪਇਆ ਖਰਚ ਕਰ ਉਹਦਾ ਕਹਾਂਗਾ ਦਰਸ਼ਨ ਨਹੀਂ ਕਰਦੇ ભગવાન ਦੇ ਆਪੇ ਕੰਮ ਕਰਿਆ ਜਾ ਦਰਸ਼ਨ ਨਹੀਂ ਕਰਦੇ ਤਾਂ ਮਤਲਬ ਕੋਈ ਵਾਨ ਹੁੰਦਾ ਦਰਸ਼ਨ ਕਰਨਾ ਰਹਦਾ ਇਹ ਕਹਿੰਦਾ ਮੈਂ ਬਹੁਤ ਵਾਨ ਅਜੇ ਆਂ ਲੋਕਾਂ ਨੂੰ ਕਿਹਾ ਰੋਈਏ ਕਰੋ ਗੁੱਸਾ ਆਇਆ ਆਪ ਦਾ ਆਪ ਤੂੰ ਡਿਨਾਈ ਕਿਉਂ ਹੈ ਅੱਜ ਉਹ ਜਿਹੜਾ ਲੋਕਾਂ ਦਾ ਦੋਸਾ ਹੋਊਗਾ ਰੋਸਾ ਹੋਊਗਾ ਉਹ ਆਂ ਦਾ ਰੋਸਾ ਜੀ ਰਗਾਣਾ ਦਾ ਰੋਸਾ ਸਭ ਝੂਠ ਅੱਪੇ ਬਾਹਰ ਆ ਗਿਆ ਆਪਣੀ ਪੁੱਛ ਘਟ ਗਈ ਨਾ ਉਹਦੀ ਉਹਦੀ ਆਪਣੇ ਕੁਛ ਜਦ ਘਟ ਜਾਂਦੀ ਆ ਦਰਵਾਜ਼ੇ ਤੇ ਐਕਸ਼ਨ ਆਉਂਦਾ ਹੈ ਗਾਲ ਤਖਦਾ ਫਿਰ ਗਾਲ ਤਖਦਾ ਉਹ ਨਹੀਂ ਹੈਗਾ ਫਿਰ ਬਾਦਲ ਮਾਨ ਹੈ ਤੇ ਦੂਜੀ ਉਹ ਉਹ ਗਾਲ ਤਖਦਾ ਉਹ ਗਾਲ ਲੈ ਤਾ ਇਸ ਕਰਕੇ ਸਾਰੇ ਇਕੱਠੇ ਨੇ ਬਾਦਲ ਉਹ ਨਾ ਜਰ ਰਦ ਹੈ ਇਥੋਂ ਰਾਹ ਪਾੜਿਆ ਹੋਇਆ ਉਹਨਾਂ ਨਾਲ ਜਰ ਆ ਬਾਦਲ ਉਥੋਂ ਪਾੜਿਆ ਨਾ ਇਹ ਤਾਂ ਸੱਚ ਹੋਵੋ ਭਗਵਾਨ ਸੰਤ ਜੀ ਨਾ ਕਾ ਨਿਰਬਲ ਮੰਨ ਤੋਂ ਇਹ ਤਾਂ ਤੇ ਵਿਜਾ ਦੂਹਾ ਤਾਂ ਕਿਉਂ ਸੱਚ ਰਿਹਾ ਬਾਦਲ ਫਿਰ ਗੁਰਬਾਣੀ ਦਾ ਦੂਹੇ ਤਾਂ ਦੀ ਗੱਲ ਹੈ ਨਾ ਕਰਦੇ ਨੇ ਰਲੇ ਬਜਟ ਦੂਹੇ ਤਾਂ ਦਾ ਸੱਤ ਜਣਾ ਨਿਰਮਲ ਮੰਤ ਸੱਤ ਜਣਾ ਦਾ ਜਿਹੜਾ ਢੇਰ ਬੰਦ ਕੋਈ ਉਹ ਤਾਂ ਛੱਡ ਦਿੱਤਾ ਗੁਰਬਾਣੀ ਨਾਲੋਂ ਬੰਦ ਤਿਆ ਗਿਆ ਹੋਇਆ ਇਹ ਤਾਂ ਤਾਂ ਰੱਖਿਆ ਹੋਇਆ ਵੀ ਪੈਸੇ ਚੱਲਣੇ ਇਹਦਾ ਪਾਠ ਵੀ ਤਾਂ ਕਰਦੇ ਨੇ ਪੈਸੇ ਜਾਣ ਨੂੰ ਵਿਚਾਰ ਨਾ ਕਰੋ ਵਿਚਾਰ ਕਰਨ ਤੇ ਬੈਨ ਹੈ ਪਾਠ ਕਰਨ ਤੇ ਬੈਨ ਹੈ ਵਾੜਾ پیسے ਚੜਾਓ ਚੜਾ ਵੇ ਵਾਸਤੇ ਸਿਰਫ ਚੜਾਵੇ ਵਾਸਤੇ ਜੇ ਕਦੇ ਦੀ ਵਿਆਖਿਆ ਹੋਣ ਲੱਗੀ ਫਿਰ ਭੱਜਾਂਗੇ ਛੱਡ ਕੇ ਫਿਰ ਜਮਾ 22 ਮਧਿਆਣੇ ਦਾ ਦਿਖੇ ਤੇ ਨਾ ਬੇਸਰਾ ਬੋਰੀਆਂ 'ਤੇ ਬੈਠ ਗਏ ਫਿਰ ਐ ਭੱਜਣਗੇ ਨਹੀਂ ਇੱਕ ਆਸ ਰੱਖੋ ਮਨ ਮਾਣੇ ਸਰਬ ਨਾਨਕ ਮਿਟ ਜਾਏ ਇੱਕ ਆਸ ਰੱਖੋ ਮਨ ਮਾਣੇ ਸਿਰਫ ਇੱਕ ਆਸ ਰੱਖੋ ਦੋ ਆਸਾਂ ਨੇ ਹੁਣ ਦੁਬਿਧਾ ਹੈ ਦੋ ਨੇ ਸੰਸਾਰ ਦੀ ਵੀ ਆਸ ਹੈ ਨਾ ਰੱਖ ਆਉਂਦੀ ਵੀ ਆਸ ਹੈ ਫਿਰ ਕੋਈ ਮੁਕਤੀ ਵੀ ਆਸ ਰਖਦਾ ਸੰਸਾਰੀ ਜਿੱਦ ਵੀ ਆਸ ਰੱਖਦਾ ਸੰਸਾਰੀ ਜਿੱਦ ਪਹਿਲਾਂ ਮੁਕਤੀ ਬਾਤ ਚ ਜੇ ਸੰਸਾਰੀ ਜਿੱਦ ਨੇ ਗਈ ਬੰ ਮੁਕਤੀ ਵੱਲ ਵੜਨੀ ਹੈ ਮੁਕਤੀ ਬੜਾ ਜਿਆਦਾ ਨੋਮ ਹੈ ਇਸ ਕਾਰਗੇ ਸੰਸਾਰੀ ਮਾਇਆ ਨੂੰ ਨਹੀਂ ਛੱਡ ਸਕਦਾ ਸੰਸਾਰੀ ਤਨ ਦਾ ਤਿਆਗ ਨਹੀਂ ਕਰ ਸਕਦਾ ਸੰਸਾਰੀ ਇਤਿਆਗ ਤਸਤੀ ਜਿਹੜੀ ਹੈ ਇੱਛਾ ਉਹ ਤਾਂ 24 ਘੰਟੇ ਰਹਿੰਦੀ ਹੈ ਆ ਦੋਈ ਜਿਆਦਾ ਨੂੰ ਦੋ ਮਿੰਟ ਬਾਅਦ ਸਵੇਰੇ ਸ਼ਾਮ ਪੈਦਾ ਹੁੰਦੀ ਹੈ ਉਹ ਵੀ ਕਿਸੇ ਤੇ ਹੁੰਦੀ ਹੈ ਕਿਸੇ ਤੇ ਹੁੰਦੀ ਹੋਈ ਬਹੁਤਾਂ ਤੇ ਹੁੰਦੀ ਹੋਈ ਹਾਂਜੀ ਇੱਕ ਆਸ ਸਰਬ ਰੋਗ ਨਾਨਕ ਮਟ ਜਾਣੇ ਇੱਕ ਆਸ ਰੱਖੋ ਮਨ ਬਸੇ ਸਰਬ ਰੋਗ ਨਾਨਕ ਮਟ ਜਾਣ ਜਿਹੜੇ ਸਾਰੇ ਉਗਣ ਨੇ ਅੰਦਰੋਂ ਖਤਮ ਹੋ ਜਾਣਗੇ ਤੇ ਇੱਕ ਆਸ ਹੋਵੇ ਬਾਕੀ ਦਾ ਉਗਣ ਮਾਇਆ ਪੈਦਾ ਕਰਦੀ ਹੈ ਮਾਇਆ ਦੀ ਇੱਛਾ ਨਾਲ ਬਾਕੀ ਉਗਣ ਸਾਰੇ ਜੇ ਇੱਕ ਆਸ ਹੋਵੇ ਮਾਇਆ ਦੇ ਨਾਲੇ ਬੈਰ ਕਰੋਦਾ ਮਾਇਆ ਦੇ ਨਾਲੇ ਕੰਕਰੋਦਾ ਮਾਇਆ ਦੇ ਨਾਲੇ वाद क्रोध काम क्रोध लोभ माया का तरह है टूटी माया टूट विकार महा लोभ तरो याहु युक्त ब्याने कई जन्म नाद जरा रेओ अपन कर के ये तो एक आस तो अपना कर्म हो गया दा हो है दा परमेश्वर दी कृपा होगी ता इधर बच गए एक आस रखो सकल रोग नानक मिट जाएंगे सारे मिट जाएंगे उधो आपा ही खत्म हो जाई ਬਾਰਗ ਦੀ ਮਿਆਦ ਹੈ ਔਗਣ ਬਹੁਤ ਨੇ ਸਾਰੇ ਔਗਣ ਆ ਬਣਦੇ ਸਾਰੇ ਔਗਣ ਆ ਬੜੇ ਰਾਵਦਾਂ ਤਾਂ ਹਾਂਜੀ